ਵਾਇਆ ਤਾਂ ਰਹਤਾ ਅੰਜਰ ਵਾਇਆ ਨੂੰ ਵੀ ਕਹਿੰਦੇ ਨੇ ਵੈਸੇ ਗਿਆਨ ਨੂੰ ਵੀ ਕਹਿੰਦੇ ਨੇ ਅੰਜਰ ਗਾਨ ਅੰਜਰ ਗਾਨ ਅੰਜਰ ਗੁਰਦੀਆ ਅਗਿਆਨ ਹਨੇਰ ਬਨਾਸ ਜਿਹੜਾ ਗਿਆਨ ਹੈ ਤੈਨੂੰ ਲੋਕ ਦਾ ਉਹ ਅੰਜਰ ਹੈ ਅੱਖ ਦੇ ਵਿੱਚ ਪਾਉਣ ਵਾਲੀ ਚੀਜ਼ ਜੜ ਵਸਤੂ ਹੈ ਗਿਆਨ ਜੜ ਵਸਤੂ ਹੁੰਦੀ ਹੈ ਜਿਹਨੂੰ ਅਸੀਂ ਗਿਆਨ ਗੁਰੂ ਕਹਿੰਦੇ ਉਹ ਵੀ ਜੜ ਕੋ ਖਰਾਕ ਹੈ ਉਹ ਚੇਤਨ ਦੀ ਖਰਾਕ ਹੈ ਪਰ ਮੈਂ ਕਹਿੰਨੇ ਕਿ ਭੋਜ ਹੈ ਉਹ ਜਿਹੜਾ ਗਿਆਨ ਗੁਰੂ ਹੈ ਵਿੱਚ ਗਿਆਨ ਗੁਰੂ ਹੈ ਜੜ ਹੈ ਚੇਤਨ ਨਹੀਂ ਹੈ ਜਿਹੜੇ ਨੂੰ ਚੇਤਨ ਬੁਲਤੇ ਰਹੋ ਉਹਨੂੰ ਸਮਝ ਨਹੀਂ ਗਲਦੀ ਚੇਤਨ ਕਿਵੇਂ ਹੋ ਜੂਗਾ ਕਪੂਰਤੀ ਬੁਝਾ ਹੋਗੀ ਫਿਰ ਕਿਉਂਕਿ ਜੇ ਕੋ ਖਾਵੇ ਜੇ ਅਸੀਂ ਇਹ ਮਨ ਲੀ ਗੇ भी ਗੁਰਿਆਈ ਦਿੱਤੀ ਸੀ ਤਾਂ ਮੁਦਾਵਲੀ ਕੱਢਣੀ ਪਊਗੀ ਵਿੱਚੋਂ ਜਿਹੜੀ ਮੁਦਾਵਲੀ ਲਿਖੀ ਸੀ ਨਾ ਪੰਜੋ ਪਾਛਰ ਉਹ ਹਟਾਉਣੀ ਪਊ ਸਾਨੂੰ ਪਰੇ ਕਿਉਂ ਥਾਲੇ ਖਿਆ ਉਹ ਕਹਿੰਦਾ ਥਾਲੇ ਵਿੱਚ ਤੇਨੀ ਵਸਤੂ ਪਈਓ ਥਾਲੇ ਬਦਲਣਾ ਪੈਜੂ ਤੁਹਾਨੂੰ ਸਾਰੀ ਬਾੜੀਆਂ ਬਦਲਣੀ ਪੈਜੂਗੀ ਥਾਲੇ ਵਿੱਚ ਤੇਨੀ ਵਸਤੂ ਪਈਓ ਸਤ ਸੰਤੋਖ ਵਿਚਾਰੋ ਵਰਤਨਾਮ ਠਾਕਰ ਕਾ ਪਈਓ ਜਿਸ ਕਾ ਸਬਤ ਜੇ ਕੋ ਖਾਵਾ ਉਨੇ ਤਾਂ ਖਾਣ ਵਾਲੀ ਏ ਥਾਲ ਦੇ ਵਿੱਚ ਪਸਤੂ ਭਾਈ ਤੇ ਅਸੀਂ ਬਣਾਉਂਦੇ ਕੋਈ ਰਾਇਦੇ ਸੀ ਚੈਤਨ ਬਣਾਤਾ ਉਹ ਤੇ ਬੁਧਾਵੜੀ ਕੁਝ ਹੋਰ ਕਹਿੰਦੀ ਹੈ ਕੀ ਇਹ ਹੋ ਸਕਦਾ ਸੀ ਉਹ ਆਪਣੀ ਤੋਂ ਖਲਾਫ ਹੈ ਗੱਲ ਇਹ ਉਹ ਆਪਣੀ ਤੋਂ ਖਲਾਫ ਹੱਲਦਾ ਹੈ ਤਾਂ ਥਾਲਾ ਖਾਣ ਵਾਲੀ ਚੀਜ਼ ਹੈ ਖਾਣ ਵਾਲੀ ਚੀਜ਼ ਖਾਣ ਵਾਲਾ ਚੈਤਨ ਹੁੰਦਾ ਖਾਣ ਵਾਲੀ ਚੀਜ਼ ਜੜ ਹੁੰਦੀ ਜੜ ਚੀਜ਼ ਹੀ ਮਾਇਆ ਰੂਪ ਹੁੰਦੀ ਅਖਰਾਂ ਦੇ ਜੜ ਚੀਜ ਆ ਸਕਦੀ ਐ ਚੇਤਨੀ ਆ ਸਕਦੀ ਐ ਅਖਰ ਉਹ ਅਖਰ ਇਹਨਾਂ ਮੈਂ ਬੋਲਣ ਵਾਲਾ ਅਖਰਾਂ ਤੋਂ ਫਿਰ ਵਾਰ ਜਿਹੜਾ ਬੋਲ ਰਿਹਾ ਜਿਹਨੇ ਬੋਲੇ ਸੀ ਅਖਰ ਜਿਹਨੇ ਲਖੇ ਸੀ ਅਖਰ ਉਹ ਖਰਾਂ ਦੇ ਵਿੱਚ ਨਹੀਂ ਆ ਲਿਖਣ ਵਾਲਾ ਵੀ ਨਹੀਂ ਬੋਲਣ ਵਾਲਾ ਵੀ ਜਿਹਨੇ ਇਹ ਲਿਖੇ ਤੇ ਸਰਨਾਮਾ ਹੁਣ ਜੁਮਾਵਾਰੀ ਅਖਰਾਂ ਦੀ ਐ ਜਿਹਨਾਂ ਅਖਰ ਲਿਖੇ ਨੇ ਉਹਦੀ ਜੁਮਾਵਾਰੀ ਨਹੀਂ ਰਹੀ ਕੋਕੜਾ ਅਖਰਾਂ ਦੇ ਵਿੱਚ गल ਬਹੁਤ ਬਰੀਕ ਬਣੀ ਸੀ ਮੋਟੀ ਸੀ ਲੇਕਿਨ ਜਿਹੜੇ ਧਰਮਕਾਦਮੀ ਹੁੰਦੇ ਨੇ ਨਾ ਜਦ ਧਰਮ ਸ਼ਰਧਾ ਦਾ ਵਿਸ਼ਾ ਮਿਲ ਜਾਏ जाए ਧਰਮ ਧਰਮਕਾਦਮੀ ਸ਼ਰਧਾ ਵਾਲ ਵੜ ਜਾ ਉਹਦੀ ਹੀਰੋ ਜਾਂਦਾ ਸ਼ਰਧਾ ਉਹਦੀ ਹੀਨ ਕਰਦੀ ਹੈ ਧਰਮਾ ਗਿਆਨ ਦਾ ਵਿਸ਼ਾ ਜੇ ਗਿਆਨ ਵਾਲ ਗਾਂ ਛੱਡ ਕੇ ਬੁੱਧੀ ਹੀਰ ਹੋ ਜਾਵੇ ਤੁਹਾਨੂੰ ਤੁਹਾਨੂੰ ਰਹਿ ਨਹੀਂ ਜੁਦਾ ਜੈ ਗਿਆਨਤਾ ਹੈ ਧਰਮ ਧਰਮ ਉਹਦਾ ਜਿਹੜੇ ਧਰਮਾ ਜਿੱਨਾਂ ਚਿਰ ਗਿਆਨ ਇਹਦੇ ਨਾਲ ਹੈ ਜਿੱਨਾਂ ਚਿਰ ਰੋਸ਼ਨੀ ਨਾਲ ਹੈ ਸਾਨੂੰ ਪਤਾ ਬਦਾਬੜੀ ਚ ਕੀ ਲਿਖਿਆ ਹੈ ਇਹ ਭੁੱਲ ਗਏ ਕਿਸ ਨੇ ਗਾਂ ਤਾਂ ਵੀ ਭਾਈ ਆਪਾਂ ਸਲਾਹ ਕਰ ਲਈ ਵੀ ਕਹਿ ਦਿਓ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਰਹਿ ਦੇਗੇ 10 5 7 ਬੰਦਾ ਦਾ ਗੁਰੂ ਹੋਈ ਨਹੀਂ ਸਕਦਾ ਚਲੋ ਕਹਿ ਲਿਆ ਉਹਨਾਂ ਨੇ ਹਲੋ ਇਹ ਹੁਣ ਅੱਜ ਹੋ ਬਾਣੀ ਨੂੰ ਗੁਰਿਆਈ ਦੇ ਦੇ। ਖਬਰ ਕੀ ਕੇ ਹੋ ਉਸ ਵੇਲੇ। ਗੁਰੂ ਰਾਨ ਸਾਹਿਬ ਤੋਂ ਥਾਰੀਓ ਤਾਂ ਉਹਨੂੰ ਬੱਲੇ ਬਾਦ ਨੂੰ ਵੀ ਪਤਾ ਸੀ ਇਸ ਗੱਲ ਦਾ। ਪਰ ਉਹਨੇ ਕਹਤਾ ਹੂ ਇਹ ਕੋਈ ਜ਼ਰੂਰੀ ਥੋੜੀ ਐ ਵੀ ਉੱਥੇ ਪ੍ਰਕਾਸ਼ ਕਰਨਾ ਸੀ ਇਹ ਕਰਨਾਂ ਦੀ। ਕਹਿ ਦੇਣਾ ਸੀ। ਜਿਵੇਂ ਲੋਬੇ ਪਾਸ਼ਾ ਨੂੰ ਕਹਤਾ ਸੀ, "ਬਾਬਾ ਵਿੱਚ ਬਕਾਲੇ।" ਉਹ ਤਾਂ ਕਹਣਾ ਸੱਤ ਕੇ ਗੁਰਿਆਈ ਦਿੱਤੀ ਸੀ। ਗੁਰਿਆਈ ਸੱਤ ਕੇ ਦੇਣੀ ਕੋਈ ਜ਼ਰੂਰੀ ਨਹੀਂ ਹੈ। ਅਧਰ ਪਾਸ਼ਾ ਨੇ ਕਹੋ ਕਹਿੰਦੇ ਹੁਣ ਕਹਾ ਕਹਿੰਦੇ ਬਕਾਲੇ ਇਹ ਦਸ ਪਾਸ਼ਾ ਵੀ ਤਾਂ ਕਹਿ ਸਕਦੇ ਸੀ ਵੀ ਬਾਈ ਵਾਲੀ ਹੈ ਗੁਰੂ ਤੁਹਾਡੇ ਕੋਲ ਪਰ ਇਹ ਜੀ ਗੱਲ ਨਹੀਂ ਹੋ ਸਕਦੀ ਕਿਉਂ ਪੰਜ ਪਿਆਰੇ ਦਾ ਹੁਕਮ ਦੇ ਰਹੇ ਨੇ ਉਹਨਾਂ ਨੂੰ ਚਮਕੌਰ ਦੀ ਢੜੀ ਚ ਉਹ ਕਹਿੰਦਾ ਤੁਸੀਂ ਉਸ ਪੰਥ ਤੁਹਾਡਾ ਮੇਰਾ ਹੈ ਨਹੀਂ ਉਹਦਾ ਉੱਥੇ ਕਹਿੰਦਾ ਨੇ ਵੀ ਚੰਗਾ ਫਿਰ ਜੇ ਸਾਡਾ ਪੰਥ ਹੈ ਅਸੀਂ ਮਾਲਕਾਂ ਤਾਂ ਸਾਡਾ ਹੁਕਮ ਤੁਸੀਂ ਬਾਹਰ ਨਿਕਲੋ ਉਹ ਕਮਾਨ ਕੇ ਬਾਲ ਨਿਕਲ ਗਏ ਫਿਰ ਉਹਨਾਂ ਹੀ ਪੰਜ ਪਿਆਰਿਆਂ ਨੂੰ ਕਿ ਮੈਂ ਕਹੇ ਤਾਂ ਉਹਨਾਂ ਪੰਜ ਪਿਆਰਿਆਂ ਨੇ ਕਿ ਮੈਂ ਕਹੇ ਤਾਂ ਵੀ ਤੋਤੇ ਬਿਨਾ ਕਿਵੇਂ ਹੋਊਗਾ ਲੋ ਵੀ ਸਾਡੇ ਕਿਹਦੇ ਲੜ ਲਾ ਸੀ ਲੜਦਾ ਸਾਨੂੰ ਲਾਤਾ ਪੰਜ ਦੇ ਪੰਜਾਂ ਦੇ ਨਾਲੇ ਤਾਂ ਗੱਲ ਬੰਨ ਲੀਏ ਸੀ ਪੰਜਾਂ ਦੇ ਲੜ ਲਾ ਲਿਆ ਨਾਲੇ ਫਿਰ ਉਹ ਉੱਥੇ ਫਿਰ ਖੜੇ ਗਏ ਅਸਲ ਜੇ ਜਦੋਂ ਹੋ ਜਾਂਦੇ ਨੇ ਕਹਿਣ ਦਾ ਮਤਲਬ ਹੈ ਨਾ ਬੁੱਧ ਫਿਰ ਬੁੱਧੀ ਹੋ ਜਾਂਦੇ ਨੇ ਅਗਲਾ ਪਿਛਲਾ ਉਹਨਾਂ ਨੂੰ ਕੁਝ ਵੀ ਯਾਦ ਰਹਿੰਦੋ ਅਗਲੀ ਪਿਛਲੀ ਬੁੱਧੀ ਪੁਰਜਾ ਨੇ ਸਰਦਾਬਾਨ ਹੋ ਗਏ ਸਿੱਖ ਹੋ ਗਏ ਸਰਦਾਬਾਨ ਬੁੱਧੀ ਹੀਰ ਵੀ ਹੋ ਗਏ ਸਰਦਾਬਾਨ ਔਰ ਬੁੱਧੀ ਹੀਰ ਇਕੱਠੇ ਹੀ ਹੋ ਜਾਂਦੇ ਸੀ ਕਿੰਨੀਆਂ ਰੋਸ਼ਨੀ ਹੋਵੇ ਬਾਹਰ ਜਦ ਆਜ ਅੱਖਾਂ ਵਿੱਚ ਲੰਦ ਹੈ ਮੈਂ ਗਿਆ ਰੋਜ਼ਰੀ ਭਈ ਹੋਵੇ ਬਾਹਰ ਮੈਂ ਰੋਜ਼ਰੀ ਨੂੰ ਕੀ ਕਰਾਂ ਜੇ ਮੈਂ ਤਾਂ ਅੱਖਾਂ ਬਿਛਲਿਓ ਲਿਖਿਆ ਹੋਵੇ ਗੁਰਬਾਣੀ ਜੋ ਮਰਜੀ ਲਿਖਿਆ ਹੋਵੇ ਮੈਂ ਤਾਂ ਅੱਖਾਂ ਵਿੱਚ ਲੀਨ ਗੁਰਬਾਣੀ ਤਾਂ ਅੱਖਾਂ ਵਿੱਚ ਜੋ ਪਿੱਛੇ ਸਭ ਸੁਣ ਕੇ ਤਾਂ ਸਭ ਭਲਾਤਾ ਇੱਕੋ ਹੀ ਗੱਲ ਆਜ ਰੱਖ ਲਈ ਕੋੜਾਂ ਜੋੜ ਲਿਆ ਪ੍ਰਕਾਸ਼ ਕੀਤਾ ਹੈ ਕੀ ਤਾਂ ਜੋੜ ਲਿਆ ਹਾਲਾਂਕਿ ਕੋਈ ਜਗ੍ਹਾ ਨਹੀਂ ਲੈਣ ਲਈ ਇਹ ਜਿਹੜੇ ਦੋ ਨੰਬਰ ਦੇ ਹੁੰਦੇ ਨੇ ਰਾਗੀ ਹੋਏ ਢਾਡੀ ਹੋਏ ਜੀ ਨੂੰ ਪਤਾ ਹੀ ਨਹੀਂ ਇਹ ਹੁੰਦੇ ਨੇ ਫਸਲੀ ਬਟੇਰੇ ਜਦ ਕੋਈ ਆਉਂਦਾ ਨਾ ਜੋੜ ਮੇਲਾ ਜਦ ਦੇ ਨੀਲੀ ਜੀਆਂ ਪੱਕਾ ਘੜਿਆਂ ਜੋ ਅੱਗੇ ਘੜਿਆਂ ਚ ਰੱਖਦੇ ਹੁੰਦੇ ਕੱਢ ਕੇ ਮੰਨ ਲਈਓ ਉਹ ਜਾ ਕੇ ਸਟੇਜ ਤੇ ਕੁਝ ਅਲਟ ਸੰਟ ਬਖਿਆ ਉਹਨਾਂ ਲੋਕਾਂ ਨੇ ਉਹੀ ਕਰ ਨੂੰ ਲੈ ਜਾਣ ਆਹ ਦਾ ਪ੍ਰਚਾਰ ਹੁੰਦਾ ਰਿਹਾ ਕੋਈ ਉਹਨੂੰ ਬਧਾ ਨਹੀਂ ਲੈ ਲੀਦੇ ਡਿਕਾ ਸਦਾ ਇਹ ਹੀ ਪ੍ਰਚਾਰ ਹੈ ਉਹ ਪ੍ਰਚਾਰ ਨਾਲ ਲੋਕ ਚਿਬੜੇ ਬੈਠੇ ਨੇ ਉਹ ਝੂਠ ਨਾਲ ਚਿਬੜ ਗਏ ਸਾਰੇ ਉਹਨੂੰ ਸੱਚ ਮੰਨੀ ਬੈਠੇ ਨੇ ਸ਼ਰਧਾ ਬਾਣ ਜੋ ਜਦੋਂ ਤਰ ਬਿਸ਼ਰਦਾਵਾਨ ਹੋ ਜਾਂਦਾ ਹੈ ਚੰਗੇ ਭਲੇ ਨੇ ਹੋ ਜਾਂਦੇ ਮਨ ਮੁਕ ਅੰਦਾ ਮਗਦ ਗਵਾਰ ਹੁਣ ਸਾਡੇ ਵੀ ਰੋਜ਼ ਸ਼ਰਦਾਵਾਨ ਸਿੱਖ ਸ਼ਰਦਾ ਸ਼ਰਦਾਵਾਨ ਸਿੱਖਦਾ ਬੋਰ ਖੁੱਦੇ ਰਹਿੰਦੇ ਹੁੰਦੇ ਨੇ ਸ਼ਰਦਾਵਾਨ ਬੋਲਦਾ ਸਭਾ ਕਾ ਰਾਮ ਬੋਲ ਉਹ ਰਾਮ ਦੀ ਆਵਾਜ਼ ਹੈ ਉਹ ਦੇਵ ਉਹ ਸ਼ੁੱਧ ਗਿਆਨ ਉਹ ਚੰਗੀ ਰਾਹ ਦਿੰਦੀ ਆ ਵੀ ਆਹ ਮਾਲਾ ਕੰਮ ਨਾ ਕਰ ਝੂਠ ਨਾ ਬੋਲ ਦੂਜਾ ਹੱਕ ਨਾ ਖਾ ਇਨਸਾਫ ਹੱਕ ਤੇ ਖੜ। ਇਹ ਦੇਵ ਹੈ। ਮਹਾਦੇਵ ਹੂੰ ਕੇ ਦੇਵਨਾਥ। ਜਿਹੜੇ ਦੇਵਨਾ ਦਾ ਦੇਵ ਹੈ ਮਹਾਦੇਵ ਹੈ ਤੋਂ ਫਿਰ ਬਟਾਓ। ਦੇਵਤਿਆਂ ਦਾ ਵੀ ਗੁਰੂ। ਜਿਵੇਂ ਸ਼ਿਵ ਜੀ ਨੂੰ ਮਹਾਦੇਵ ਕਹਿੰਦੇ ਨੇ। ਜਿਵੇਂ ਆਪਾਂ ਪੰਚਾਇਤੋ ਸਰਪੰਚ ਬਣ ਜਾਂਦਾ। ਪਹਿਲਾਂ ਪੰਚ ਚੋਣਦੇ ਨੇ ਫਿਰ ਸਰਪੰਚ ਬਣ ਜਾਂਦਾ ਸਰਪੰਚੋ ਮੁਖ ਹੋ ਗਿਆ। ਮਹਾਦੇਵ ਨੂੰ ਉਨਾ ਵਾਸਤੇ ਫਿਰ ਨਾਥ ਹੈ ਕਿ ਉਹਨਾਂ ਉਹ ਵੀ ਤੇਰੇ ਕਾਬੂ ਚ ਨੇ ਉਹਨਾਂ ਵਾਸਤੇ ਨਾਥ ਹੈ ਉਹ ਵੀ ਤੇਰੇ ਕਾਬੂ ਚ ਨੇ hath pai ਉਹਨੂੰ ਉਹ ਵੀ ਤੇਰੇ ਬਾਣੀ ਦੇ ਹੁਕਮ ਚ ਨੇ ਉਹ ਵੀ ਜੇ ਤੂੰ ਸਿਖਾਇਆ ਉਹਨੂੰ ਉਹ ਹੀ ਬਣ ਕੇ ਰਹਿਣਾ ਇੱਥੇ ਭਗਤ ਦਾ ਦੇਵਨਾਥ ਭਗਤਾਂ ਦਾ ਦੇਵਨਾਥ ਹੈ ਤੂੰ ਭਾਵੇਂ ਤੇਰੇ ਬਾਣੀ ਦੇ ਹੁਕਮ ਚ ਨੇ ਫਗਤ ਤੇਰੇ ਪਾਣੇ ਦੇ ਵਿੱਚ ਚਲਦੇ ਨੇ ਉਹਨਾਂ ਦੇ ਨਾਥ ਹਨ ਆਪਨਾਥ ਹਨ ਨਾਥ ਨਾਥੀ ਸਭ ਵਾਹ ਦੇਵਨ ਕੇ ਦੇਵਨਾਥ ਊਮ ਕੇ ਭਜਈਆ ਹੈ ਊਮ ਕੇ ਭਜਈਆ ਊਮ ਕੇ ਰਾਜਾ ਵਿਸ਼ਰੂ ਊਮ ਤੇ ਕਬਜ਼ਾ ਕਰਨ ਵਾਲਾ ਸ਼ਿਵ ਜੀ ਨੇ ਤੇ ਕਬਜ਼ਾ ਕਰਨ ਵਾਲਾ ਦੇਵਨਾਥ ਨਹੀਂ ਪੂਜਦੇ ਸ਼ਿਵ ਜਿਹੜਾ ਹੈਗਾ ਉਹ ਊਮ ਤੇ ਕਬਜ਼ਾ ਨਹੀਂ ਕਰਦਾ ਉਹ ਕਹਦਾ ਵਿਸ਼ਨੂੰ ਦੋ ਕਲਾਕਰੀਆਂ ਅਡਰ ਨੇ ਦੋਵੇਂ ਭਗਤ ਮੰਤਰ ਨੇ ਆਪਣੇ ਆਪ ਨੂੰ ਉਹ ਕਹਿੰਦਾ ਜਿਹੜੀ ਧਰਤੀ ਹੈ ਤੋਂ ਲਾਭ ਉਠਾ ਕੇ ਗਰੀਬਾਂ ਚ ਕੋ ਜਾ ਵੰਡੋ ਕੋਈ ਧੱਕਾ ਨਾ ਕਰੇ ਦੂਏ ਦਾ ਦੂਏ ਦਾ ਹੱਕ ਨਾ ਖੋਵੇ ਵਿਸ਼ਨੂੰ ਅਸਲ ਜ ਮਤਲਬ ਇਹ ਹੈ ਜਿਹਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਗੁਰਬਾਣੀ ਨੇ ਉਹ ਕਹਿੰਦਾ ਸਾਰਿਆਂ ਨੇ ਇੱਕੋ ਜਿਹਾ ਹੱਕ ਰੱਖੇ ਸਾਰੀ ਧਰਤੀ ਤੇ ਧਰਤੀ ਦੇ ਜਿਹਨਾਂ ਅਵਤਾਰ ਸਨ ਸਭ ਦਾ ਇੱਕੋ ਜਿਹਾ ਹੱਕ ਕਾਇਮ ਕਰੇ ਆਪਣਾ ਵੀ ਉਹ ਨਹੀਂ ਰੱਖੇ ਮੇਰਾ ਵੀ ਫालतू ਦੀ ਕਿਸ ਤਰ੍ਹਾਂ ਕਿਸੇ ਤਰੀਕੇ ਨਾਲ ਕਮਿਨਸ ਤੇਰੀ ਗੱਲ ਕਹਿੰਦੇ ਕਿਸ ਤਰ੍ਹਾਂ ਕਿਸੇ ਤਰੀਕੇ ਨਾਲ ਗੱਲ ਤਾਂ ਇਹੀ ਕਹਿੰਦੇ ਨੇ ਪਰ ਉੱਥੇ ਵੀ ਫਿਰ ਬڑا ਛੋਟਾ ਹੈਦਾ ਉਹਨਾਂ ਚੋ ਵੀ ਉਹ ਵੀ ਚਾਹੁੰਦੇ ਨੇ ਮੈਰੀ ਹੋਂਦ ਹੋਊਗੀ ਮੇਰੀ ਹੋ ਰਹੇ ਉਹ ਕਮਜ਼ੋਰੀ ਜਿਹੜੀ ਹੈ ਆਦਮੀ ਦੇ ਵਿੱਚ ਜਨਰਲ ਕਮਜ਼ੋਰੀ ਉਹ ਨਹੀਂ ਹੋਣਾ ਚਾਹੀਦਾ ਜਾਨ ਵੀ ਨਾ ਹੈ ਉਹ ਅਗਿਆਨਤਾ ਜੇ ਗੱਲ ਕਰਨੀ ਚਾਹੇ ਅਗਿਆਨਤਾ ਨਾਲ ਗੱਲ ਨਹੀਂ ਹੋ ਸਕਦੀ ਵਕਾਰਾਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਕਿੰਨਾਂ ਤੱਕ ਆਦਮੀ ਤਾਂ ਜਨਰਲ ਆਦਮੀ ਹੀ ਨੇ ਸਾਰੇ ਆਦਮੀ ਨੇ ਕਮਜ਼ੋਰੀਆਂ ਹੈ ਆਪਣੇ ਵਾਸਤੇ ਉਹ ਜੀ ਹਮਦਲਦੀ ਆਪਣੇ ਬੰਦੇ ਵਾਸਤੇ ਦੂਜੇ ਵੱੱਲੇ ਇੱਕੋ ਜਿਹਾ ਬੋਲਣਾ ਬੜੀ ਮੁਸ਼ਕਲ ਗੱਲ ਹੈ ਸਭ ਨੂੰ ਇੱਕੋ ਜਿਹਾ ਬੋਲਣਾ ਬੈਰੀਅਰ ਮਿੱਤਰ ਨੂੰ ਇੱਕੋ ਜਿਹਾ ਬੋਲਣਾ ਬੜੀ ਮੁਸ਼ਕਲ ਗੱਲ ਹੈ ਉਹ ਡਵੈਲਪਮੈਂਟ ਉਹਨਾਂ ਦੀ ਹੈ ਜੀ ਤਾਂ ਰੂਲ ਬੰਦ ਹੈ ਨਾ ਹੋਰ ਉਹ ਡਵੈਲਪਮੈਂਟ ਜੇ ਨਾ ਹੈ ਨਹੀਂ ਕੋਈ ਆ ਵਧੇ ਨਹੀਂ ਜਾ ਸਕਦਾ ਸਭ ਇਹ ਤਾਂ ਨਹੀਂ ਜਾ ਸਕਦਾ ਪੂਮ ਕੇ ਮੋਹਿਆ ਮਹਾਬਾਲ ਕੇ ਵੋਹਾ ਵੋਹਿਆ ਇਹ ਬਹੁਤ ਛੋਟਾ ਜਿਹਾ ਬੱਚਾ ਹੈ ਉਹਦੇ ਨਾਲ ਤੈਨੂੰ ਜਿਆਦਾ ਮੋਹ ਹੈ ਵਹਾਬਾਲ ਹੈ ਛੋਟਾ ਵਾਲਾ ਜਿਹੜਾ ਉਹ ਸਾਰਿਆਂ ਨਾਲ ਸਾਰਿਆਂ ਨੂੰ ਉਹਦੇ ਨਾਲ ਮੋਹ ਹੁੰਦਾ ਕੁਦਰਤੀ ਕਿ ਉਹਦੇ ਅੰਦਰ ਕੋਈ ਬਾਫਰੀ ਨਾ ਹੁੰਦਾ ਜੋ ਛੋਟੇ ਬੱਚੇ ਦੋ ਆ ਬੈਰ ਵਿਰੋਧ ਨਹੀਂ ਹੁੰਦਾ ਸਭ ਨੂੰ ਇੱਕੋ ਜਿਹਾ ਸਮਝਦਾ ਇਸ ਕਰਕੇ ਬਾਲਬੁੱਧ ਨੂੰ ਤੂੰ ਬਹੁਤ ਅੱਛਾ ਸਮਝਦੇ ਜਿੰਦੀ ਵੀ ਬਾਲਬੁੱਧ ਹੈ ਜਿਹੜਾ ਸਿਆਣਾ ਬਾਲ ਬੁੱਧੇ ਆ ਜਿਹਦੇ ਕੋਲ ਉਹਦੇ ਨਾਲ ਤੈਨੂੰ ਸਪੈਸ਼ਲ ਬੋਹ ਹੈ ਮੁਹਈਆ ਮਹਾਬਾਲ ਕੀ ਹਾਂ ਉਹਦੇ ਨਾਲ ਬੋਹ ਤੇਰਾ ਜ਼ਿਆਦਾ ਹੈ ਬਾਲ ਬੁੱਧਾ ਵਾਲੇ ਨਾਲ ਜਿਹੜੀ ਸ਼ਰਾਰਤੀ ਬੁੱਧੀ ਉਹਦੇ ਫਿਰ ਕਹਾਂ ਜਾ ਕੇ ਜਿਹੜਾ ਤੇਰੇ ਕੰਮ 'ਚ ਵਿਗਨ ਪਾਉਣ ਲੱਗ ਜਾਂਦਾ ਉਹਦੇ ਨਾਲ ਬੋਹ ਘਟ ਜਾਂਦਾ ਜੋ ਤੂੰ ਕਰ ਰਹਿਣਾ ਉਹਦੇ 'ਚ ਵਿਗਨ ਰੋੜੇ ਅਟਕਾਉਣ ਲੱਗ ਜਾਂਦਾ ਨਾ ਜਿਹੜਾ ਉਹਦੇ ਵਿੱਚ ਜਿਹੜੀ ਅਕਲ ਤੇਰੇ ਕੰਪਿਟਿਟ ਕਾ ਬਣ ਲੱਗ ਜਾਂਦੀ ਐ ਨਾ ਜਿਆਦਾ ਜੋ ਤੂੰ ਕਰ ਰਿਹਾ ਸੰਸਾਰ ਚ ਉਹਦੇ ਨਾਲ ਉਹ ਘਟ ਜਾਂਦਾ ਵਹੀਆ ਬਾਲ ਕੇ ਹਾਂ ਰਾਜਨ ਕੇ ਰਾਜਾ ਮਹਾਸਾਜ ਹੋਂ ਕੇ ਸਾਜਾ ਵਾ ਰਾਜਨ ਕੇ ਰਾਜਾ ਤੂੰ ਰਾਜਾ ਦਾ ਵੀ ਰਾਜਾ ਮਹਾਸਾਜ ਹੋਂ ਕੋ ਸਾਜਾ ਸਾਸਮਾਨ ਰਾਜਿਆਂ ਕੋਲ ਹੁੰਦਾ ਨਾ ਬਹੁਤ ਜਿਆਦਾ ਤੇਰੇ ਕੋਲ ਸਾਸਮਾਨ ਕਿਹਾ ਜਾ ਕਰਤਾ ਤੇਰੇ ਸਭ ਕੁਝ ਰਾਜਾ ਦੇ ਕਰਤਾ ਹੋਵੇ ਜਾਏ ਤਾਂ ਹੀ ਭਜਿਆ ਫਿਰਦਾ ਨਾ ਹੋ ਹੋਰ ਉਹ ਤੇ ਘਰ ਕਮੀ ਹੈ ਤੇਰੇ ਘਰ ਕਮੀ ਕੋਈ ਹੈ ਨਹੀਂ ਇਸ ਕਰਕੇ ਤੈਨੂੰ ਕਿਸੇ ਦੇ ਖੋਖੀ ਦੀ ਲੋੜ ਨਹੀਂ ਕਰਤਾ ਤੇਰੇ ਸਭ ਕੁਝ ਘਰ ਸਭ ਕੁਝ ਹੈ ਮਹਾ ਜੋਗ ਹੂ ਕਿ ਹੋ ਬਾ ਹੋ ਕੇ ਜੋਗ ਹੋ ਜਿਨ੍ਹਾਂ ਕੋ ਮਹਾ ਆਪਣੇ ਆਪ ਨੂੰ ਪਹੁੰਚਦੇ ਨੇ ਲੋ ਉਹਨਾਂ ਦੀ ਵੀ ਵਰਤੀ ਟੁੱਟ ਜਾਂਦੀ ਹੈ ਤੇਰੀ ਵਰਤੀ ਲੱਗੀ ਹੋ ਰਹੀ ਹੈ ਤੂੰ ਸਾਰਿਆਂ ਨਾਲ ਜੁੜਿਆ ਹੋਇਆ ਹੈ। ਵਾਹ ਜੋਗੀ ਸਿਰਫ ਆਪਣੇ ਨਾਲ ਜੁੜਦਾ। ਜੋਗੀ ਕੀ ਹੈ? ਆਪਣੇ ਮੂਲ ਨਾਲ ਜੁੜਨਾ ਜੋਗ ਹੈ। ਉਹ ਆਪਣੇ ਨਾਲ ਜੁੜਦਾ ਤੂੰ ਆਪਣੇ ਨਾਲ ਜੁੜ ਕੇ ਸਾਰੇ ਸੰਸਾਰ ਨਾਲ ਜੁੜਿਆ ਹੈ। ਪਰ ਅੰਦਰ ਦੇ ਜੁੜਿਆ ਹੈ ਬਾਹਰ ਦੇ ਨਹੀਂ ਜੁੜਿਆ। ਜੁੜਿਆ ਹੋਇਆ ਹੋਵੇ ਔਰ ਮੋਹ ਨਾ ਹੋਵੇ ਉਹ ਜੋਗ ਹੈ। ਜੁੜਿਆ ਹੋਇਆ ਹੋਵੇ 뭐 ਨਾ ਹੋਵੇ ਹੋ ਜਾਊਗਾ ਇੱਕੋ ਜਿਹਾ ਜੁੜਿਆ ਹੋਵੇ ਬੈਰੀ ਬਗਾਨਾ ਨਾ ਹੋਵੇ ਉਹ ਨੂੰ ਕਹਿੰਦੇ ਜੋਗ ਇਹ ਨਹੀਂ ਜੁੜਿਆ ਹੋਇਆ ਹੈਗਾ ਜਿਵੇਂ ਅਸੀਂ ਜੁੜੇ ਹੋਏ ਹਾਂ ਅਸੀਂ ਕਦੇ ਘੱਟ ਜੁੜਿਆ ਹੈ ਕਦੇ ਵੱਧ ਜੁੜਿਆ ਹੋਇਆ ਇੱਕੋ ਜਿਹਾ ਜੁੜਿਆ ਤ੍ਰਈਆ ਦ੍ਰੁਮ ਵਿਸ਼ਾਲ ਕੇ ਤ੍ਰਈਆ ਦ੍ਰੁਮ ਵਿਸ਼ਾਲ ਕੇ ਭਾਵੇਂ ਲੱਕ ਨੂਕ ਨਾ ਇਹ ਸਰੀਰ ਤੇ ਦਰਖਤਾਂ ਦਾ ਛਿਲਕਾ ਹੀ ਪੈਣਦਾ ਹੋਵੇ ਦਰਖਤਾਂ ਦੇ ਪੱਤੇ আর ਛਿਲਕਾ ਹੀ ਪੈਣਦੇ ਨੇ ਨਾ ਜੋਗੀ ਹਾਂ ਤਰਈਆ ਦਰੋਂ ਮਛਾਲ ਕੇ ਦਰਖਤ ਦਰਖਤ ਨੂੰ ਕਹਿੰਦੇ ਛਿਲਕਾ ਹੀ ਪੈਣਦਾ ਹੋਵੇ ਚੀਜ਼ ਵਾਸਤੇ ਉਹਦੇ ਨਾਲ ਵੀ ਜ਼ਿਆਦਾ ਜੋਗ ਹੈ ਤੈਨੂੰ ਕਿਸੇ ਵਸਤ ਦੀ ਲੋੜ ਨੂੰ ਸਮਝਦਾ ਹੋਵੇ ਦਰਖਤਾਂ ਦੀ ਜਿਹੜੀ ਹੁੰਦੀ ਹੈ ਨਾ ਪੱਤੇ ਛਿਲਕਾ ਬਾਹਰ ਦੇ ਡਰਕ ਤੋਂ ਛਿਲਕਾ ਵੀ ਹੈ ਜਾਂਦਾ ਨਾ ਉਹ ਕਪੜੇ ਵਰ ਜਿਵੇਂ ਕੇਲਾ ਹੈ ਕੇਲਾ ਛਿਲਕਾ ਨਹੀਂ ਹੁੰਦਾ ਉਹ ਛਿਲਕਾ ਲਾ ਲਾ ਕੇ ਉਹਦੇ ਕਪੜੇ ਬਣ ਜਾਂਦੇ ਨੇ ਉਹੀ ਬੰਦ ਕਾਮਨਾ ਕੇ ਕਾਰਨ ਹੈ ਕੋ ਹਰ ਹੈ ਕਾਮਨਾ ਕੇ ਕਾਰਨ ਤੂੰ ਕਾਮਨਾ ਕਰਨ ਵਾਲੇ ਕਾਮਨਾ ਤੇਰੇ ਚ ਪੈਦਾ ਹੁੰਦੀਆਂ ਨੇ ਸਾਰੀਆਂ ਕਾਮਨਾ ਕਿੱਥੋਂ ਹੁੰਦੀਆਂ ਨੇ ਸੰਸਾਰ ਦੇ ਵਿੱਚ ਹਰ ਕਿਸੇ ਦੀ ਕਾਮਨਾ ਪੂਰੀ ਕਰਦਾ ਨੂੰ ਜੇ ਤੇਰੇ ਚ ਵੀ ਕਾਬਲਾ ਹੈਗੀ ਆ ਜਿਹੜਾ ਕਾਬਲਾ ਨਹੀਂ ਕਰਦਾ ਉਹਦੀ ਦੇਖੋ ਕਿਸੇ ਦੀ ਕਾਮਨਾ ਪੂਰੀ ਕਰ ਲਈ ਵੀ ਤੇ ਕਾਬਲੇ ਹੀ ਸਭਦਿਆਂ ਲੋੜਾਂ ਪੂਰੀਆਂ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕਾਬਲੇ ਸਾਡੇ ਚ ਤੂੰ ਸਾਰੇ ਸੰਸਾਰ ਦਾ ਚਿੰਤਾ ਤੈਨੂੰ ਸਭ ਕੁਝ ਚਿੰਤਾ ਤੇ ਮੈਂ ਚਿੰਤਾ ਜਿੱਥੇ ਕਾਮਨਾ ਹੈਗੀ ਹੋ ਕਾਮਨਾ ਕਰ ਕੁਬਦਤਾ ਕੋ ਹਾਰ ਹੈ ਪਰ ਕੁਬਦ ਕੁਮਦਤਾ ਕੋ ਹਾਰ ਹੈ ਕੁਮਦ ਨਹੀਂ ਹੈ ਤੇਰੀ ਬੁੱਧੀ ਨੂੰ ਪੁੱਠਾ ਘੇੜਾ ਜਿਹੋ ਜਨਾ ਕਹੁੰਦਾ ਸਿੱਧਾ ਸਿੱਧਤਾ ਕੇ ਸਾਥੀ ਹੈ ਕਿ ਸਿੱਧਤਾ ਕੇ ਸਾਥੀ ਸਿੱਧੀ ਪ੍ਰਾਪਤ ਕਰਨ ਵਾਲੇ ਨੇ ਸੋਝੀ ਪ੍ਰਾਪਤ ਕਰਨ ਵਾਲੇ ਨੇ ਚੰਗੀ ਬੁੱਧੀ ਦੀ ਪ੍ਰਾਪਤੀ ਵਾਲੇ ਨੇ ਸਿੱਧੇ ਕੰਮ ਕਰਨ ਵਾਲੇ ਨੇ ਕੋ ਉਹਨਾਂ ਦਾ ਸਾਥੀ ਹੈ ਤੂੰ ਉਹਨਾਂ ਦਾ ਸਾਥੀ ਹੈ ਉਹਨਾਂ ਦਾ ਸਾਥ ਦਿੰਦੇ ਕੀ ਕਾਲ ਹੈ ਕੁਚਾਲ ਕੇ ਜਿਹੜੀਆਂ ਨੇ ਕੁਚਾਲ ਚੱਲ ਕੁਚਾਲ ਚੱਲਣਾ ਕੀ ਨੇ ਕਿ ਕਿਸਰੀ ਕੇ ਲਾਣਾ ਸੱਚ ਧਰਮ ਨੂੰ ਨਹੀਂ ਹੋ ਲਾਦੀਏ ਕੁਚਾਲ ਚਾਲ ਕਿਸਰੀ ਕਹਿਣਾ ਸਿੱਖੀ ਨੂੰ ਫੇਲ ਕਰਦੀ ਹੈ ਰਾ ਇਹ ਕਾਇ ਕਹੀ ਅਰਦਾਸ ਵੀ ਹੁੰਦੀ ਏ ਇਹ ਤਾਂ ਜੀ ਦੇਵੀ ਦੀ ਗੱਲ ਹੈ ਉਹ ਕਾਲ ਦਾ ਨਾਮ ਕਾਲ ਦਾ ਨਾਮ ਲਓ ਜੀ ਫਲਾਣੇ ਦਾ ਲਓ ਜੀ ਇਹ ਕੁਚਾਲ ਚਾਲ ਸਭ ਅਬਰਦਨੀ ਜੀ ਇਸ ਕਾਇ ਨਾਮ ਦਾ ਬਾਣੀ ਕਿਹੜੀ ਪੜੀ ਸੀ ਇਹ ਜਿਹੜੀ ਸਭ ਕੁਚਾਲ ਚਾਲਾਂ ਨੇ ਇਹ ਕੁਚਾਲ ਚਾਲ ਨੂੰ ਕੁਚਲ ਦੇਣ ਵਾਲਾ ਤੂੰ ਇਹਨਾਂ ਦਾ ਕਾਲ ਐ ਕਾਲ ਹੈ ਕੁਚਾਲ ਕੇ ਕਾਲ ਹੈ ਕੁਚਾਲ ਕੇ ਇਹ ਸਾਰੀਆਂ ਕੁਚਾਲ ਚਾਲਾਂ ਨੇ ਨਾ ਕੋਟਲੀਤੀ ਦੀ ਚਾਲਾਂ ਇਹਨਾਂ ਦੀ ਮੌਤ ਵਣ ਕੇ ਪ੍ਰਗਟ ਹੁੰਦੇ ਤੂੰ ਸੱਚੀ ਜਦ ਪ੍ਰਗਟ ਹੁੰਦਾ ਸੁਭੁਦ ਜਦ ਪ੍ਰਗਟ ਹੁੰਦੀ ਹੈ ਇਹਨਾਂ ਲੋਕਾਂ ਵਾਸਤੇ ਤਲਵਾਰ ਪੈਦਾ ਹੁੰਦੀ ਹੈ ਇਹਨਾਂ ਦੀ ਮੌਤ ਹੈ ਕੁਚਾਲ ਉਹ ਚਾਲ ਜਿਹਨੂੰ ਲੋਕ ਨਾ ਸਮਝ ਸਕਣ ਇਹ ساری ਕੋਚਾਲ ਚਾਲ ਚਾਲ ਹੈ ਚੱਲੀ ਹੋਈ ਹੈ ਜਿਹੜੀ ਇਹਨਾਂ ਤੋਂ ਚੱਲੀ ਹੈ ਪਲਾਨਡ ਪ੍ਰੋਗਰਾਮ ਨੂੰ ਇੱਕ ਖਾਸ ਮੌਕੇ ਤੇ ਜਾ ਕੇ ਉਹ ਕੁਝ ਲੈਣਾ ਕੱਢ ਕੇ ਕੋਲੋਂ ਕਰਕੇ ਉਹਦਾ ਖਾਸ ਤੈਮ ਤੇ ਪ੍ਰਚਾਰ ਕੀਤਾ ਕਿਸੇ ਨੇ ਪਲਾਨਡ ਪ੍ਰੋਗਰਾਮ ਨਾ ਕਰਾਇਆ ਦਰਸ਼ਕ ਸੰਦੇ ਹੁਣ ਦੇ ਨਾ ਕਰ ਲੈਣ ਇਹਦੇ ਪਿੱਛੇ ਕੀ ਕੋਚਾਲ ਚਾਲ ਹੈ ਕੀ ਅਸੀਂ ਜਾਣਦੇ ਨਹੀਂ ਸਮਝਦਾ ਨਹੀਂ ਕੌਣ ਨਹੀਂ ਜਾਣਦਾ ਸੁਰਜਾ ਸਾਰਿਆਂ ਨੂੰ ਪਰ ਉਹਨੂੰ ਐ ਨਹੀਂ ਪਤਾ ਸ਼ਾਮਕਰਨ ਜਿਹੜਾ ਘੋੜਾ ਪੈਦਾ ਹੁੰਦਾ ਉਹਦੀ ਬੜੀ ਜਿੱਤ ਹੁੰਦੀ ਹੈ ਲੋਕ ਦੇਖਣ ਹੁੰਦੇ ਬੜੀ ਮਸ਼ਹੂਰੀ ਹੁੰਦੀ ਹੈ ਸ਼ਾਮਕਰਨ ਘੋੜੇ ਦੀ ਸ਼ਾਮਕਰਨ ਘੋੜਾ ਕਿਹਨੂੰ ਕਹਿੰਦੇ ਨੇ ਕਿ ਕੰਨ ਕਾਲੇ ਹੁੰਦੇ ਨੇ ਬਾਕੀ ਫੂਣੀ ਵਰਗਾ ਚਿੱਟਾ ਹੁੰਦਾ ਸਾਰਾ ਦੁੱਧ ਵਰਗਾ ਚਿੱਟਾ ਸਿਰ ਕੰਨ ਕੰਨ ਕਾਲੇ ਹੁੰਦੇ ਜਦੋਂ ਪੈਦਾ ਹੋ ਜਾਵੇ ਸ਼ਾਮਕਰਨ ਘੋੜਾ ਨਾ ਕਿਤੇ ਉਹ ਹੁੰਦਾ ਜੇ ਮੈਂ ਦਰਸ਼ਨ ਤੋਂ ਪੈਦਾ ਹੋਇਆ ਹੋਇਆ ਉਦੋਂ ਕੋਈ ਕਿਸੇ ਆਦਮੀ ਨੇ ਅਸ਼ਵਮੇਧ ਯੱਗ ਕਰਨਾ ਹੁੰਦਾ ਸਿਆਮਕਰਨ ਕੋੜਾ ਤਾਂ ਪੈਦਾ ਹੁੰਦਾ ਕੋਈ ਚੱਕਰਵਰਤੀ ਰਾਜਾ ਪ੍ਰਗਟ ਹੋਣ ਦਾ ਨਿਸ਼ਾਨੀ ਹੁੰਦੀ ਹੈ ਸਿਆਮਕਰਨ ਕੋੜਾ ਵੀ ਚੱਕਰਵਰਤੀ ਰਾਜਾ ਪ੍ਰਗਟ ਹੋਊਗਾ ਹੁਣ ਕੋਈ ਹੈ ਧਰਤੀ ਤੇ ਉਹ ਚੱਕਰਵਰਤੀ ਹੋਊਗਾ ਸਿਆਮਕਰਨ ਕੋੜਾ ਜਿਹਦੇ ਸ਼ਾਮਗਨ ਘੋੜੇ ਨੂੰ ਦੇਖਣ ਤੋਂ ਨਹੀਂ ਆਉਂਦੀ ਪਹਿਲਾਂ ਉਹਦੀ ਬੜੀ ਵਾਵਾ ਹੁੰਦੀ ਹੈ ਫਿਰ ਕੋਈ ਰਾਜਾ ਜਿਹੜਾ ਤਖੜਾ ਹੁੰਦਾ ਹੈ ਸ਼ਾਮਗਨ ਘੋੜਾ ਹਾਸਲ ਕਰ ਲੈਂਦਾ ਜੇ ਤਾਂ ਪੈਸਿਆਂ ਨੂੰ ਮਿਲ ਜਾਏ ਤਾਂ ਖਰੀਦ ਲੈਂਦਾ ਨਹੀਂ ਧੱਕੇ ਨਾਲ ਲੈ ਲੈਂਦਾ ਵੱਡਾ ਹੁੰਦਾ ਵੀ ਤਖੜਾ ਹੁੰਦਾ ਰਾਜੇ ਤਾਂ ਕੋਣਾ ਕੀ ਹੋ ਉਹ ਲੈ ਜਾਂਦਾ ਫਿਰ ਉਹ ਪਲਾਨ ਬਣਾਉਂਦਾ ਵੀ ਹੁਣ ਆਪਾਂ ਘੋੜਾ ਤਾਂ ਆਪਣੇ ਕੋ ਆ ਗਿਆ ਘੋੜਾ ਪ੍ਰਾਪਤ ਕਰਨਾ ਹੀ ਨਿਸ਼ਾਨੀ ਹੁੰਦੀ ਹੈ ਵੀ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਚਕਰਵਤੀ ਮਹਾਰਾਜਾ ਹੋ ਸਕਦਾ ਇਹ ਗੱਲ ਦਾ ਦਰੁਕਰਨ ਸੀ ਮੈਂ ਇਹਨਾਂ ਨੂੰ ਪ੍ਰੂਫ ਦੇ ਰਿਹਾ ਜਿਹਦੇ ਖਿਲਾਫ ਨੇ ਇਹ ਕੀ ਹੁੰਦਾ ਇਹਨਾਂ ਦਾ ਰਖਿਆ ਵੀ ਦਿਖਾ ਦੇ ਲੈ ਨੂੰ ਤੁਸੀਂ ਕੀ ਹੋ ਥੋੜਾ ਜਾਨੂੰ ਕਿਉਂ ਹੋਇਆ ਪਤੰਦਰ ਦਾ ਹੋ ਚੁੱਕਿਆ ਜਾਨਵਰ ਨੂੰ ਚਾਹੀਦਾ ਸ਼ਾਮਕਰਨ ਘੋੜਾ ਵੀ ਚਾਹੀਦਾ ਸ਼ਾਮਕਰਨ ਘੋੜੇ ਦੇ ਬਿਨਾ ਅਸ਼ਮੇ ਦੀ ਅਗ ਨਹੀਂ ਹੁੰਦਾ ਅਸ਼ਮੇ ਦੀ ਅਗ ਤਾਂ ਉਹਨਾਂ ਪਰਗਟੇ ਹੁੰਦਾ ਉਹ ਰਾਜਾ ਨੇ ਪ੍ਰਗਟ ਹੋਣਾ ਅਛਾ ਮੇਰੇ ਅੱਖ ਦੇ ਵਿੱਚ ਉਹ ਵੀ ਤਾਂ ਤਾਲੀ ਪਤਾ ਲਗੂ ਦਾ ਇਹ ਦੋਸਤ ਦਾ ਅਪ ਸੂਚੀ ਮੇਲ ਹੈ ਆਖਰ ਕੀ ਆ ਸਾਮਕਲ ਘੋੜਾ ਛੱਡਿਆ ਜਾਂਦਾ ਜਿਵੇਂ ਦੁਰਿਆ ਫਿਰਦਾ ਨਾ ਬਾਜਾ ਚੱਕੀਂ ਕਿਤੇ ਉੱਥੇ ਕਿਤੇ ਉੱਥੇ ਸਾਮਕਲ ਘੋੜੇ ਵਾਂਗੂ ਆਖਰ ਫੇਰੋਦੀ ਕੋਈ ਲਗਾਮ ਫੜ ਲੈਂਦਾ ਜਿਵੇਂ ਇਥੇ ਲਾਵਾ ਕੋਸਲੇ ਫੜ ਲਈ ਸੀ ਲਗਾਮ ਰਾਮਚੰਦਰ ਨੇ ਘੋੜਾ ਛੱਡਿਆ ਸੀ ਨਾ ਉਹ ਅੰਬਰ ਸਰ ਕੋ ਲਗਾਂ ਫੜ ਲਈ ਜਾ ਗਏ ਉਹਦੀ ਲੈ ਵਰ ਕੋ ਸੁਣ ਫਿਰ ਉਥੇ ਜੰਗ ਹੋਇਆ ਆਗਰ ਉਹਦੇ ਥੋੜੀ ਸਾਰੇ ਉਹ ਤਾਂ ਗੱਲ ਅਲੱਗ ਹੈ ਉਹ ਘਰ ਦੀ ਗੱਲ ਸੀ ਉਹਨਾਂ ਦੀ ਬੁੱਢੇ ਵੀ ਉਹਦੇ ਸੀ ਬਾਅਦ ਚ ਪਰ ਹਾਰਦਾ ਗਏ ਨੇ ਸਾਰੇ ਰੱਬ ਜੁੱਧਰ ਵੀ ਹਰਾਤਾ ਉਹਨਾਂ ਨੂੰ ਆਗਰ ਉਹ ਘੋੜੇ ਦੀ ਉਹ ਬਲੀ ਦਿੱਤੀ ਜਾਂਦੀ ਹੈ ਉਹ ਬਲੀ ਦਾ ਬੱਕਰਾ ਹੁੰਦਾ ਸਾਮ ਘੋੜਾ ਜਿਹਦੀ ਮਗਰ ਫੌਜਾਂ ਹੁੰਦੀਆਂ ਨੇ ਮੂਰੇ ਹੁੰਦਾ ਉਹੋ ਉਹ ਬਲੀ ਦਾ ਬੱਕਰਾ ਹੁੰਦਾ ਵਦੈਨੀ ਗੱਲ ਕਹਾ ਆਪੇ ਸਮਝ ਲੈਣਗੇ ਕੀ ਗੱਲ ਇਹ ਕੁਚਾਲ-ਜਾਲ ਦੇ ਪਿਛੇ ਜਿਹੜੀ ਤਲਵਾਰ ਹੈ ਨਾ ਜਿਹੜੀ ਕੋੜੇ ਤੇ ਚੱਲਣੀ ਹੈ ਉਹ ਪ੍ਰਗਟ ਹੋਈ ਹੋਈ ਆ ਬਣੀ ਹੋਈ ਆ ਉਹ ਗੱਲ ਕਾਹਰੇ ਨੇ ਕਿ ਕਾਲ ਹੈ ਕੁਚਾਲ ਕੇ ਕਾਲ ਹੈ ਕੁਚਾਲ ਕੇ ਇਹਦਾ ਕਾਲ ਪੈਦਾ ਹੋ ਚੁਕਿਆ ਪਹਿਲਾਂ ਸ਼ਾਮਕੜਨ ਘੋੜੇ ਦਾ ਇਸ ਕਰਕੇ ਸ਼ਾਮਕੜਨ ਘੋੜਾ ਕੋਈ ਚਾਹੀਦਾ ਸੀ ਤਲਵਾਰ ਨੂੰ ਪਰਖਣ ਵਾਸਤੇ ਵੀ ਕੋਈ ਚਾਹੀਦਾ ਤਲਵਾਰ ਨੂੰ ਪਰਖਣ ਵਾਸਤੇ ਚਾਹੀਦਾ ਨਹੀਂ ਕੁਝ ਚਕਾਰ ਕਿਹਦੇ ਤੇ ਤਲਵਾਰ ਹੋ ਪਰਖੋ ਦੀ ਕਿ ਮੈਂ ਤਲਵਾਰ ਦੀ ਤਲਵਾਰ ਦੀ ਪਰਖ ਜਮੈਂ ਉਹ ਲੈ ਨਾ ਇੱਕ ਬਦੂਕ ਉਹਨੇ ਲਿਆਇਆ ਇੱਕ ਢਾਲ ਬਣਾ ਕੇ ਲਿਆਇਆ ਉਹ ਕਹਿੰਦਾ ਮੇਰੀ ਢਾਲ ਜਗੋਲੀ ਨਹੀਂ ਪਾਰ ਹੁੰਦੀ ਉਹ ਕਹਿੰਦਾ ਮੇਰੀ ਬਦੂਕ ਐਸੀ ਹੈ ਕੋਈ ਢਾਲ ਛੱੜਦੀ ਨਹੀਂ ਪਤਾ ਤਾਂ ਚੱਲ ਲੱਗੂ ਜੇ ਚੱਲੂ ਪਤਾ ਤਾਂ ਜਦੇ ਲੱਗੂ ਜੇ ਚੱਲੂ ਜਦ ਵਾਰ ਮਜੀ ਦੋ ਹੋਰਨ ਤੇ ਨਾ ਰਹੋ ਪਰਬਸੂਰਨ ਕੇ ਬਨਵਾ ਜਦ ਦੋਹਾਂ ਪਾਸੇ ਚੱਲਣ ਗਿਆ ਉਹ ਕਹਿੰਦਾ ਮੇਰੀ ਪਿੰਡੇ ਖਾਂ ਕਹਿੰਦਾ ਸੀ ਮੇਰੀ ਗਰਦਨ ਨਹੀਂ ਵੰਡ ਹੁੰਦੀ ਪਿੰਡੇ ਖਾਂਦੀ ਗਰਦਨ ਐਨੀ ਮੋਟੀ ਸੀ ਕੋਈ ਯੋਧਾ ਇੱਕ ਵਾਰ ਚੋਦੀ ਕਰਦਣ ਵੱਢ ਦਵੇ ਇਹ ਗੱਲ ਮਸ਼ਹੂਰ ਸੀ ਨਹੀਂ ਵੱਢ ਸਕਦਾ ਸ਼ੇਮਪਾਸ਼ਾ ਨੇ ਪਾਲਿਆ ਸੀ ਪਿੰਡੇ ਸਾਨੂੰ ਜਵਾਨ ਸੀ ਬਹੁਤ ਸваяਆ ਗੱਲ ਤੁਸੀਂ ਸ਼ੇਮਪਾਸ਼ਾ ਨੂੰ ਦਾ ਪਿੰਡੇ ਖਾਂਦ ਖੁਦ ਆਪਣੇ ਬਰਾਬਰ ਬਦਾਮ ਦਿੰਦੇ ਸੀ ਰਾਣ ਕੇ ਨੂੰ ਬੁਲਾਉਂਦੇ ਸੀ ਪਰ ਜਦ ਤਲਵਾਰ ਸ਼ੇਮਪਾਸ਼ਾ ਨੇ ਮਾਰੀ ਗਰਦਨ ਜੇ ਨਹੀਂ ਫੇਰ ਮਾਰੀ ਕਿ ਉਹ ਗਾਤਰੇ ਆ ਹੱਡੀਆਂ ਵੱਢ ਕੇ ਪਿੰਜਰ ਵੱਢ ਕੇ ਉਹ ਪਰਮ ਤੋੜਦਾ ਦੁਨੀਆਂ ਦਾ ਵੀ ਗਰਦਨ ਉਹ ਕਹਿੰਦੇ ਗਰਦਨ ਕੀ ਆ ਸਾਰੀਆਂ ਹੱਡੀਆਂ ਪਿਉੜਦੀਆਂ ਛਾਤੀ ਦੀ ਇੱਕ ਪਾਸਾ ਹੀ ਹੜਾਤਾ ਕਾਲ ਹੈ ਕਾਲ ਸੀ ਉਹਨੂੰ ਉਹ ਦੋ ਨਾਲ ਹੱਡੀਆਂ ਵੀ ਸਾਰੀਆਂ ਵਡੀਆਂ ਲਈ। ਹੇਂ ਛੀਰ ਕੈਸੀ ਛੀਰਾਵਦ? ਛਾਹ ਚ ਕੈਸੀ ਛਤਰਾਨੇਰ। ਛੀਰ ਕੈਸੀ ਛੀਰਾਵਦ? ਛੀਰ ਕੀ ਹੁੰਦਾ? ਛੀਰ ਹੁੰਦਾ ਦੁੱਧ। ਜਿੱਤੇ ਤੱਕ ਛੀਰਾ ਗੁਰਮਤ ਹੈ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਤੇ ਤੱਕ ਇਹ ਦੁੱਧ ਦਾ ਗੁਰਬਾਣੀ ਗੁਰਬਾਣੀ ਵਿੱਚ ਜਿਹੜੀ ਕੀਰਤੀ ਹੈ ਪਰਮੇਸ਼ਰ ਦੀ ਦੁੱਧ ਸਮਾਨ ਸ਼ੀਰ ਕੈਸੀ ਸ਼ੀਰਾਵਦ ਸ਼ੀਰਾਵਦ ਕਹਿੰਦੇ ਨੇ ਦੁੱਧ ਦਾ ਸਮੁੰਦਰ ਦੁੱਧ ਦਾ ਸਮੁੰਦਰ ਸੰਸਾਰ ਇਤੇ ਦਿਉਤ ਖੀਰ ਸਾਗਰ ਜੀ ਕਹਿੰਦੇ ਨੇ ਖੀਰ ਸਾਗਰਾ ਗੁਰਬਾਣੀ ਖੀਰ ਸਾਗਰੇ ਹੈ ਅਜਿਹਾ ਗੁਰਬਾਣੀ ਹੈ ਨਾ ਸਾਡੇ ਕੋਲੇ ਖੀਰ ਸਾਗ ਕਰਾ ਖੀਰ ਦੁੱਧ ਖੀਰ ਦੁੱਧ ਤਤ ਵਿੱਚ ਪੂਰਾ ਹੈ ਛਾਚ ਕਿਹਸੀ ਛਤਰਾ ਨੇਰ ਪਰ ਜਾ ਛਤਰਾ ਨੇਰ ਬਣ ਜਾਣੀਆਂ ਜਦ ਕੈਸੇ ਪੰਕਾਰੀ ਨੇ ਨੂੰ ਪੰਕਾਰੀ ਕੋ ਚਲੀ ਗਈ ਨਾ ਹਿਰਦੇ ਵਿੱਚ ਉਹਨੇ ਜਿਆਦਾ ਅਰਥਾਉਣੇ ਵਿੱਚ ਛਾਛੇ ਰਹਿ ਜਾਣੀ ਛਾਛ ਪੀਏ ਸੰਸਾਰ ਸੰਸਾਰੀ ਆਦਮੀ ਹੈ ਜਿਹੜਾ ਉਹਨੇ ਇਹਦੇ ਵਿੱਚ ਛਾਛ ਛਾਛ ਉਹਦੇ ਉਹਨੇ ਛਾਛ ਦਾ ਹੀ ਮੁੱਢ ਨਹੀਂ ਨੇ ਬਸ ਗੁਰਬਾਣੀ ਗੁਰਬਾਣੀ ਦੇ ਅੰਦਰ ਅੰਦਰ ਤਾਂ ਹੈਗਾ ਦੁੱਧ ਜਦ ਬੋਲ ਦਿੰਦਾ ਨਾ ਮਨੁੱਖ ਕੋਈ ਇਹ ਇਹਦਾ ਲੱਸੀ ਬਣਾ ਦਿੰਦਾ ਸਭ ਸਾਰੀ ਗੱਲ ਬਣਾ ਦਿੰਦਾ ਜਿਹਦੇ ਸਾਰੀ ਗੱਲ ਬਣਾ ਕੇ ਪ੍ਰਚਾਰ ਕੀਤਾ ਲੋ ਸਾਰੀ ਗੱਲ ਨੇ ਜਿਹੜੇ ਆਪਣੇ ਆਪ ਨੂੰ ਫੱਟੇਖਾਂ ਕਹਉਂਦੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਇਹ ਗੱਲ ਦਾ ਕਦੋਂ ਇਹ ਲੱਸੀ ਬਣ ਜਾਂਦੀ ਹੈ ਕਦੋਂ ਤੱਕ ਇਹ ਦੁੱਧ ਛਪਾਕਰ ਜੈਸੀ ਸ਼ਭੀ ਕਲਿੰਦਰੀ ਜਿੱਥੇ ਤੱਕ ਆਹ ਕਹਾ ਹੈਗੀ ਜਗਨੋ ਜਲਦੀ ਕਲਿੰਦਰੀ ਖੁੱਲ ਜਿਹੜੀ ਕਲਪਨਾ ਸਾਡੇ ਅੰਦਰ ਚੱਲਦੀ ਹੈ ਉਹ ਕ੍ਰਿਸ਼ਨ ਨੂੰ ਅਵਤਾਰ ਬੰਦੇ ਨੇ ਜਿਹੜੇ ਦੇਹ ਧਾਰੀ ਨੂੰ ਜਿੱਥੇ ਤੱਕ ਮਨ ਹੈ ਗਾ ਲੋ ਕਲਿੰਦਰੀ ਦਾ ਕਿਨਾਰਾ ਕਲਿੰਦਰੀ ਜਗਨੋ ਨੂੰ ਕਹਿੰਦੇ ਨੇ ਪੌਟਾ ਸਾਹਿਬ ਜਗਨੋ ਦੇ ਕੰਡੇ ਸੀ ਕਲਿੰਦਰੀ ਉਹਨੂੰ ਕਹਿੰਦੇ ਨੇ ਜਗਨੋ ਜਮੁਨਾ ਦੇ ਕਿਨਾਰੇ ਕਿਨਾਰੇ ਕ੍ਰਿਸ਼ਨ ਦੀ ਭਗਤੀ ਹੁੰਦੀ ਹੈ। ਕ੍ਰਿਸ਼ਨ ਅਵਤਾਰ ਸਾਰਾ ਜਮੁਨਾ ਦੇ ਖੰਡੇ ਲਿਖਿਆ ਸਾਰਾ ਕ੍ਰਿਸ਼ਨ ਅਵਤਾਰ ਉੱਥੇ ਲਿਖਿਆ ਬੈਠ ਕੇ। ਉੱਥੇ ਉਹਦੀ ਜਿਹੜੀ ਉਸਤਤੀ ਕਰਦੇ ਨੇ ਕ੍ਰਿਸ਼ਨ ਨੂੰ ਬੁਲਾ ਕੇ ਕਰਦੇ ਨੇ। ਕ੍ਰਿਸ਼ਨ ਭਗਤੀ ਨਾਲ ਚੰਦਰ ਨਾਲ ਚੰਦਰ ਕ੍ਰਿਸ਼ਨ ਕੁਚੰਦਰ ਚੰਦਰਮਾ ਕਹਿੰਦੇ ਨੇ ਨਾ ਚੰਦਰ ਬੰਸੀ ਬਾਣ ਕੇ ਚੰਦਰ ਬੰਸੀ ਹੈ ਮਨ ਵੀ ਜੋਤ ਸਰੂਪ ਹੈ ਮਨ ਵੀ ਜੋਤ ਸਰੂਪ ਹੈ ਨਾ ਵਸੋਦੀ ਜੋਤ ਇਹ ਜੀ ਜੋਤ ਹੈ ਸਮਝ ਲੋ ਜਹ ਜੀ ਤੇਰੀ ਹੈ ਉਹ ਕਹਿੰਦੇ ਨੇ ਤੋਹੁ ਸੋਹੁ ਤੋਹੁ ਸੋਹ ਤੋਲੇ ਹੈ ਕਲਿੰਦਰੀ ਕੇ ਵਾਲੀ ਗੱਲ ਆ ਹੈ ਸ਼ਿਫਾਕਰ ਕਿੰਸੀ ਛਭੀ ਕਲੇਦਰੀ ਦੇ ਗੋਲਗਾ ਸ਼ਿਪਾਕਰ ਚੰਦਰਮੈਨ ਨੂੰ ਕਹਿੰਦੇ ਨੇ ਨਾ ਸ਼ਿਪਾਕਰ ਸ਼ਿਪਾਕਰ ਚੰਦਰਮੈ ਵਰਗੀ ਸ਼ਮੀਦ ਦਾ ਪ੍ਰਚਾਰ ਕਰ ਰਹੇ ਨੇ ਦੇ ਕੂਲ ਵਾਲੇ ਕ੍ਰਿਸ਼ਨ ਵੈਸਾ ਮਾਯਾ ਜੈ ਜੈ ਤੂੰ ਉਹ ਹੋ ਜਾਈ ਮਾਯਾ ਜੋ ਹੈ ਸੀ ਸਿਹਾਰ ਪਰ ਤੂਰ ਮੈਂ ਜੇ ਤਾਂ ਦੀ ਗੱਲ ਜੇ ਤਾਂ ਧਾਲ ਦੀ ਗੱਲ ਕਰੀਏ ਫਿਰ ਤਾਂ ਠੀਕ ਹੈ ਜੇ ਤੂੰ ਕਰੀਏ ਸ਼ਬਦ ਨਾਲ ਫਿਰ ਦੋਏ ਨਹੀਂ ਹਾਲ। ਢਾਲ ਢਾਲ ਹੈ। ਢਾਲ ਨੂੰ ਅੱਦੇ ਨੂੰ ਤਾਂ ਕਹਿ ਸਕਦਾ ਹੈ। ਜੈਸਾ ਤੂੰ ਬ੍ਰਹਮ ਨੂੰ ਕਹਿ ਸਕਦਾ ਹੈ ਇਹ। ਬ੍ਰਹਮ ਨੂੰ ਕਹਿ ਸਕਦਾ ਹੈ ਜਿਹੜਾ ਬ੍ਰਹਮਾ ਹੈ, ਬ੍ਰਹਮਾ ਜਿਹੜਾ ਹੈ ਬ੍ਰਹਮ ਨੂੰ ਕਹਿ ਸਕਦਾ ਹੈ। ਅੰਤਰਾ ਤੋਂ ਉਹਨੂੰ ਬਾਹਰਲੀ ਆਤਮਾ ਕਹਿ ਸਕਦੀ ਹੈ ਜੈਸਾ ਤੂੰ ਐਸਾ ਮੈਂ। ਪਰ ਜਿਹੜਾ ਫਿਰਸ਼ ਹੋ ਵਰਸ਼ ਨੂੰ ਨਹੀਂ ਕਹਿ ਸਕਦਾ ਨਾ ਉਹ ਤਾਂ ਕਹੇ ਨਾ ਉਹ ਨਾ ਸਾਬਤ ਕਹੇ ਸਾਬਤ ਹੋ ਕੇ ਵੀ ਵਰਸ਼ ਨੂੰ ਨਹੀਂ ਕਹਿ ਸਕਦਾ ਜੈਸਾ ਤੂੰ ਹੈ ਮੈਂ ਉਹ ਸਮਝਦਾ ਓਏ ਕੈਸਾ ਮੇਰੇ ਵਿੱਚ ਤੂੰ ਹੈ ਮੇਰੇ ਵਿੱਚ ਤੂੰ ਹੈ ਤਾਂ ਕਹਿ ਸਕਦਾ ਪਰ ਜੈਸਾ ਤੂੰ ਐਸਾ ਦਾਣਾ ਕਿ ਮੈਂ ਕਹ ਦੂਗਾ ਪੇੜੂ ਜੈਸਾ ਤੂੰ ਹੈ ਸਮਝਦਾ ਓਣੀ ਕਹ ਸਕਦਾ ਇਸ ਕਰਕੇ ਦੋ ਪੌੜੀਆਂ ਥੱਲੇ ਹੈ ਗਿਆਨ ਕਲਿੰਦਰੀ ਦੇ ਖੂਲ ਵਾਲਿਆਂ ਦਾ ਦੋ ਪੌੜੀਆਂ ਥੱਲੇ ਆ ਜਿਹਨੇ ਮਨ ਵੀ ਖੋਜ ਲੈਣਾ ਤਨ ਵਿੱਚੋਂ ਮਨੋ ਵਿਗਿਆਨੀ ਦੋ ਪੌੜੀਆਂ ਥੱਲੇ ਆ ਜਿਹਨੇ ਤਾਨਾਰ ਮਨ ਦੋਏ ਖੋਜ ਲੈ ਇੱਕ ਹੋਏ ਜਿਹੜਾ ਇੱਕ ਹੋ ਗਿਆ ਉਹ ਇੱਕ ਪੌੜੀ ਥੱਲੇ ਆ ਜਿਹੜਾ ਸੰਤੋਖੀ ਹੋ ਗਿਆ ਇੱਕ ਪੌੜੀ ਥੱਲੇ ਆ ਉੱਗ ਗਿਆ ਇੱਕ ਹੋਏ ਤਲ ਉਹ ਉਹ ਇੱਕ ਪੌੜੀ ਥੱਲੇ ਇਹਨੇ ਤਨ ਵਿੱਚੋਂ ਮਨ ਖੋਜ ਲਿਆ ਉਹ ਉਹ ਦੋ ਪੌੜੀਆਂ ਦੇ ਥੱਲੇ ਆ ਜੀ ਕਿਉਂ ਮਨ ਦੇ ਵਿੱਚੋਂ ਉਹ ਵੀ ਤਾਂ ਹੋਜਣਾ ਮਨ ਵਿੱਚ ਆ ਪੈਣਾ ਜਿਹੜਾ ਉਹ ਵੀ ਤਾਂ ਖੋਜਣਾ ਆਤਮਾ ਤਾਂ ਹੋ ਗਈ ਪ੍ਰਾਤਮਿਕ ਨਹੀਂ ਬਦਲ ਗਿਆ ਆਦਮ ਪ੍ਰਾਤਮ ਇਕੋ ਕਰਾ ਆਦਮ ਜੀਨ ਪ੍ਰਾਤਮ ਜੀਨੋ ਆਤਮਾ ਤਾਂ ਜੀਨ ਲਈ ਆਪਣਾ ਤਾਂ ਜੀਨ ਲੇ ਪਰ ਪ੍ਰਾਤਮ ਨਾ ਜੋ ਖੋਜਿਆ ਇਹਨੇ ਆਤਮ ਖੋਜੀਏ ਦੋ ਬੋੜੀਆਂ ਥੱਲੇ ਪ੍ਰਾਤਮਿਕ ਨਹੀਂ ਖੋਜਿਆ ਉਹਨੇ ਪ੍ਰਾਤਮਿਕ ਹੋਜਿਆ ਇੱਕ ਬੋੜੀ ਥੱਲੇ ਰਹਿ ਗਿਆ ਇੱਕ ਬੋੜੀ ਕੀ ਹੈ ਇੱਕ ਹੋਇਆ ਤਾਂ ਉਗਬਾ ਬਸ ਉਗੂ ਦਾ ਉਗਣ ਦੇ ਵਿੱਚ ਵੀ ਆਪਣੇ ਆਪ ਨਹੀਂ ਉਗ ਸਕਦਾ ਤਾਂ ਇੱਕ ਬੋੜੀ ਥੱਲੇ ਨਹੀਂ ਤਾਂ ਜੇ ਉਗਪੇ ਖੋਦੀ ਸਾਰੇ ਇਹ ਕੋਹ ਕਹ ਜਦ ਨਹੀਂ ਉਗਪੇਦਾ ਇਹ ਗੱਲ ਤਾਂ ਬੋੜੀ ਥੱਲੇ ਹੈ ਸ਼ਾਇਦ ਇੱਥੇ ਜੇ ਬੋੜੀ ਥੱਲੇ ਨਾ ਦਸੀਏ ਪਰ ਪੈਦਾ ਹੋ ਰੁੱਕੇ ਹੁਰ ਹੁਤਾ ਹੋਏ ਦੀ ਸ਼ਰਤ ਹੈ ਉੱਥੇ ਉਗੂਗਾ ਰੁਤਾ ਹੋਏ ਦੇਹੋ ਜਿਨ੍ਹਾਂ ਨੂੰ ਗਿਆਨ ਨਹੀਂ ਮਿਲਿਆ ਗੁਰਬਤ ਦਾ ਇੱਕ ਹੋ ਕੇ ਬਿਨਾ ਜਮੇ ਇਹ ਦੇਵ ਲੋਕ ਚਲੇ ਗਏ ਹੁਣ ਜਨ ਲੈਣਗੇ ਉਹ ਰੋਤਾ ਦੇਖੋ ਨਾ ਪੱਠ ਤਾਂ ਵਧਾ ਰਹਿੰਦਾ ਧਰਤੀ ਦੇ ਉੱਤੇ ਬੀਜ ਵਿੱਚ ਪਿਆ ਰਹਿੰਦਾ ਧਰਤੀ ਦੇ ਦੀ ਉਗਦਾ ਬਾਰਿਸ਼ ਪੈਦੀ ਹੋ ਜੇ ਢਾੜਦਾ ਮੀਂਹ ਹੁੰਦਾ ਹੈ ਵੀ ਤਾਂ ਬੱਚੇ ਵੇਖਦਾ ਧਰਤੀ ਦੇ ਵੀ ਪੈਂਦਾ ਰੋ ਗਿਆ ਉਹਨਾਂ ਕਾਫੂ ਸਾਰੇ ਰੁੱਤਾਂ ਦੀਆਂ ਜਦ بارش ਗਰਮਤ ਪ੍ਰਗਟ ਹੁੰਦੀ ਹੈ بارش ਹੁੰਦੀ ਹੈ ਨਾ ਮੇਗੇ ਨੂੰ ਫਰਮਾਨ ਜਾਂਦਾ ਬਰਸੋ ਕਿਰਪਾ ਧਾਰ ਤਾਂ ਉਗਦਾ ਉਹ ਜੇ ਨਾ ਜਰ ਕਿਰਪਾ ਧਾਰ ਵਰਸਦੀ ਨਹੀਂ ਉਗਦਾ ਨਹੀਂ ਹੈ ਰੁੱਤੀ ਹੁ ਰਤ ਹੋਏ ਰਤ ਜਦ ਹੁੰਦੀ ਹੈ ਜਦ ਬਰਸਾਤ ਆਉਂਦੀ ਹੈ ਜਾਦ ਕੋਈ ਵੇਗਾ ਭੇਜ ਜਾਏ ਹੋ ਉਪਰੋਂ ਜਦ ਬਿਨਾ ਕਰਨਾਂ ਦੇ ਸੋਣ ਵਾਲੀ ਬਾਣੀ ਪ੍ਰਗਟ ਕਰਦਾ ਨਾ ਆ ਹੰਸੁੰਦਰ ਰੋਮ ਦੇ ਵਿੱਚ ਹਸੜੀ ਦੀ ਮਹਿਕ ਵਰਗੀ ਤੇਰੀ ਸੁਭਾਅ ਹੰਸਣੇ ਦੀ ਮਹਿਕ ਵਾਂਗੂ ਤੈਨੂੰ ਬੰਦੇ ਦੇ ਲੋਕ ਉਹਦੇ ਨਾਲ ਸੁਭਾਅ ਦਿੰਦੇ ਰੇ ਆਪ ਆਪਣੀ ਬੁੱਧ ਹਯੇਤੀ ਲੋਕ ਤੇਰੀ ਕੇ ਗੁਰ ਦੀ ਗੱਲ ਚਲਦੀ ਹੈ ਗੁਰੂ ਦੀ ਨਹੀਂ ਚਲਦੀ ਅਸਲੀ ਦਾ ਲਿਖਿਆ ਹੋਇਆ ਹਾਂ ਹੀਰਾ ਸੀ ਹਸੈਨਾਬਾਦ ਹੀਰਾ ਸੀ ਹੁਸੈਨਾ ਹੁਸੈਨਾਬਾਦ ਦੇ ਵਿੱਚ ਇਤਨੂੰ ਹੀਰੇ ਬੁਗ ਬੋਲਦੇ ਨੇ ਹੀਰਾ ਹਰ ਵਿਸਰੇ ਪ੍ਰਭ ਹੀਰੇ ਹੀਰਾ ਬੇਕੇ ਹੈ ਨਾ ਊਂ ਉਜੈਨਾਵਾ ਤੋਂ ਸ਼ੁਰੂ ਹੋਇਆ ਹੀ ਰਖਣ ਹੀਰਾ ਬਣਾ ਹਜਨਾਵਾ ਜੋ ਕਿ ਹੈ ਕਿਸੇ ਨੇ ਗੰਗਾ ਕੈਸੀ ਧਾਰ ਚਲੀ ਗੱਗਾ ਕੈਸੀ ਧਾਰ ਚੱਲੀ ਸਤੋ ਸਿੱਧ ਤਰੀਕੇ ਨਾਲ ਇੱਥੋਂ ਕੁਝ ਇਕੱਠਾ ਕੀਤਾ ਕਿ ਤੋ ਹੀਰਾ ਕਿਹਾ ਕਿਸੇ ਨੇ ਸਾਰੀ ਗੰਗਾ ਦੀ ਧਾਰ ਬਣਾ ਲਈ ਕਿਤੇ ਹੰਸ ਨਹੀਂ ਕਿਹਾ ਇਹ ਗੁਰਬਾਣੀ ਦੀ ਇੱਕ ਪੋਰੀ ਪੋਰੀ ਭਗਤਾਂ ਦੇ ਵਾਲਾ ਬਣਾਤੀ ਸਾਰੇ ਤੇ ਸੋਭਾ ਕਰਦੀ ਇਕੱਠੀ ਇਕਥੋ ਇਹ ਕੱਢਦੀ ਹੋਈ ਸਾਰੇ ਸ਼ਾਸਤਰ ਸੰਪਰਤਾਂ ਦੇ ਸਾਰੇ ਕੱਟ ਤੇ ਸਤੈ ਸਮੁੰਦਰ ਧਾਰ ਵਗਾਤੀ ਸਤ ਲੋਗ ਸਤ ਪਰਲ ਜਿਹੜੇ ਨਾ ਨਾ 14 ਲੋਗ ਸਤ ਪਤਲ ਸਤ ਆਕਾਸ ਨੂੰ ਕੱਟ ਕੇ ਸੱਚ ਘਣ ਇਹ ਪੂਰੀ ਇਹ ਤੋਂ ਕੁਛ ਲਿਆ ਉੱਤੋਂ ਕੁਛ ਲਿਆ ਸਾਰੇ ਗੁਣ ਤੇਰੇ ਇੱਕ ਜਗ੍ਹਾ ਕਰਤੇ ਗੁਰਮਤਿ ਦੇ ਕੋਮਣੇ ਕੋਮਾਲਾ ਦੇ ਪਰ ਉੱਤੇ ਸਾਰੇ ਇਹ ਚੀਜ਼ਾਂ ਹਾਂਜੀ ਪਾਰਾ ਸੀ ਪਲਾਉਗੜ ਪਾਰਾ ਸੀ ਪਲਾਉਗੜ ਪਾਰਾ ਦੇਖੋ ਪਾਰਾ ਵੀ ਚਮਕਦਾ ਹੁੰਦਾ ਪਾਰੇ ਤੋਂ ਸੋਨਾ ਬੜ ਜਾਂਦਾ ਕਹਿੰਦੇ ਰੱਬ ਦਾ ਹੀ ਫਰਕ ਹੈ ਪਾਰੇ ਆ ਚ ਕੋਈ ਫਰਕ ਨਹੀਂ ਰੱਬ ਦਾ ਵੀ ਫਰਕ ਹੈ ਵਜ਼ਨ ਦਾ ਵੀ ਫਰਕ ਹੈ ਥੋੜਾ ਜਿਹਾ ਪਾਰਾ ਹੁਣ ਹੁੰਦਾ ਦੋ ਦਾਰੀ ਉੱਪਰ। ਪਾਰਾ ਦੀ ਪਲਾਊਗੜ ਪਲਾਊਗੜ ਦੇ ਵਿੱਚ ਤੈਨੂੰ ਪਾਰਾ ਜਿਵੇਂ ਚਮਕ ਰਿਆ ਨਾ ਉਹ ਹੀ ਸੋਭਾ ਦਿੰਦੜ। ਇਹ ਜਿਹਾ ਪਾਰਾ ਹੈ ਨਾ ਇਹੋ ਜੀ ਪਰਮੇਸ਼ਰ ਦੀ ਸੋਭਾ ਹੈ ਚਮਕੀਲੀ ਚਿਬਕੀਲੀ ਪਾਰਾ ਬਦਵ ਨਹੀਂ ਨਾ ਹੁੰਦਾ। ਰੂਪਾ ਕੈਸੀ ਰਾਮਪੁਰ? ਰਾਮਪੁਰ ਦੇ ਵਿੱਚ ਤੈਨੂੰ ਚਾਂਦੀ ਰਾਮਪੁਰ ਕਰਦੈ। ਚਾਂਦੀ ਵੀ ਚਿੱਟੀ ਹੋਦੀ ਹੈ। ਹਾਂ ਸੋਰਾ ਸੀ ਸਰੰਗਾਬਾਦ। ਸੋਰਾ ਸਰੰਗਬਾਦ ਦੇ ਵਿੱਚ ਜ਼ਿਆਦਾ ਹੁੰਦਾ। ਆ ਸੋਰਾ ਨਿਕਲਦਾ ਨਹੀਂ ਚਿੱਟਾ ਧਰਤੀ ਚੋਂ। ਸਰੰਗਬਾਦ ਦੇ ਵਿੱਚ ਸੋਰਾ ਜਿੱਥੇ ਆਮ ਹੋਵੇ। ਕਹਿੰਦੇ ਕਿਵੇਂ ਫੈਲੀ ਹੋਈ ਉਹਦੀ? ਸੋਬਾ ਜਦੋਂ ਸੋਰਾ ਫੈਲਿਆ ਧਰਤੀ ਤੇ ਸਾਰੇ ਹੀ ਆ। ਸੋਰਾ ਸੀ ਸਰੰਗਬਾਦ। ਜਿੱਦੋਂ ਤੋਂ ਸਰੰਗਬਾਦ ਸੋਰਾ ਹੀ ਸੋਰਾ ਦੀਦਾ। ਸੀ ਵਰਗੀ। ਸੋਰਾ ਸੀ ਸਰੰਗਬਾਦ। ਸਰੰਗਬਾਦ ਕਹਿੰਦੇ ਉਹਦੀ ਆ ਜਿਵੇਂ ਫੈਲੇ ਆਪਣੇ ਚਿੱਟਾ-ਚਿੱਟਾ ਦੀਦਾ ਰਾਤ ਨੂੰ। ਸਾਰੇ ਐਂ ਫੈਲੀ ਹੋਈ ਹੈ। ਨਿੱਕੇ ਰਹੀ ਝੂਲ ਕੇ। ਨਿੱਕੇ ਰਹੀ ਝੂਲ ਕੇ। ਸਾਰੇ ਜਮੇ ਹੈ ਸੋਹਣੀ ਸੋਹਣੀ ਜਿੱਦੀ ਨੇ ਤੇਰੀ ਉਸਤਤੀਓ ਕਰਦੇ ਨੇ ਔਰ ਸਮਝੋ ਉਹਨਾਂ ਦਾ ਮਨ ਚੂਲਦਾ ਉਦੋਂ ਉਸਤਤੀ ਕਰਦਾ ਉਹਨਾਂ ਮਨ ਨੂੰ ਬੜਾ ਆਨੰਦ ਚੰਪਾ ਸੀ ਜੰਦੇਰੀ ਕੋਟ ਚਾਂਦਨੀ ਸੀ ਜਾਂਦਾਗੜ ਚੰਪਾ ਚੰਦੇਰੀ ਜਿਹੜੇ ਸ਼ਹਿਰ ਹੈ ਉਹਦੇ ਚ ਚੰਪਾ ਬਤੀਕ ਸ਼ਹਿਰ ਦਾ ਰਹੇ ਹੁੰਦੇ ਸਟੇਸ਼ਨ ਵੀ ਹੁੰਦਾ ਹਾਂ ਚੰਦੇਰੀ ਹਾਂ ਚੰਪਾ ਸੀ ਚੰਦੇਰੀ ਕੋਟ ਚਾਦਨੀ ਸੀ ਜਾਂਦਾਗੜ ਕੋਟ ਚਾਦਨੀ ਜਾਂਦਾਗੜ ਦੇ ਵਿੱਚ ਇਹ ਸ਼ਹਿਰਾਂ ਦੇ ਨਾਮ ਨੇ ਲੋਕ ਅਲੱਗ-ਅਲੱਗ ਲੋਕ ਕੀਰਤੀ ਤਿਹਾਰੀ ਰਹੀ ਮਾਲਤੀ ਸੀ ਫੂਲ ਬਸ ਉੱਥੇ ਬਾਲਤੀ ਦੇ ਫੁੱਲ ਵਰਗੀ ਲੂਡ ਦੇ ਖੁਸ਼ਬੂਦ ਨਾ ਮਾਲਤੀ ਦੇ ਫਲਵਾਰ ਦਾ ਇਹਨਾਂ ਸ਼ਹਿਰਾਂ ਚ ਮਾਲਤੀ ਦੇ ਫੁੱਲਾਂ ਨਾਲ ਦੰਦ ਵੀ ਜਿਵੇਂ ਇਹਦੀ ਖੁਸ਼ਬੂ ਫੈਲੀ ਹੋਈ ਹੈ ਉਹਦੀ ਸਾਰੇ ਖੁਸ਼ਬੂ ਫੈਲੀ ਹੋਈ ਹੈ ਸਾਰਿਆਂ ਦੇ ਉਸੇ ਦੀ ਖੁਸ਼ਬੂ ਹੈ ਖੁਸ਼ਬੂ ਨਾਲ ਦੱਤਾ ਹੈ ਨਾ ਲੋਬੇ ਪਾਛਾ ਤੇ ਪ੍ਰਮਾਣ ਦਿੱਤਾ ਖੁਸ਼ਬੂ ਦਾ ਖੁਸ਼ਬੂ ਦਾ ਪ੍ਰਮਾਣ ਕਿਤੇ ਤਾਂ ਆਇਆ ਹੀ ਹੈ ਨਾ ਪੋਪ ਜੈਸੇ ਬਾਸ ਬਸਤ ਹੈ ਕਹਿੰਦੇ ਜਿਵੇਂ ਫੁੱਲਾਂ ਦੇ ਵਿੱਚ ਖੁਸ਼ਬੂ ਹੁੰਦੀ ਹੈ ਮੁਕਰਮਾ ਹੈ ਜੈਸੇ ਛਾਈ ਤੈਸੇ ਹੀ ਅਰ ਬਸੇ ਨਰਤਰ ਘਾੜੀ ਖੋਜੋ ਭਾਈ ਉਹਨਾਂ ਨੇ ਵੀ ਕਿਹਾ ਜਿਵੇਂ ਫੁੱਲ ਦੇ ਵਿੱਚ ਆ ਫੁੱਲ ਹੈ ਇਹਦੇ ਫਟਕ ਹੁੰਦਾ ਸ਼ੀਸ਼ਾ ਹੁੰਦਾ ਜਿਹੜਾ ਅੱਖ ਦੇ ਵਿੱਚ ਆਪਾਂ ਐਨਕ ਤੇ ਲਾਉਂਦੇ ਪੱਥਰ ਦਾ ਹੁੰਦਾ ਪੱਥਰ ਦਾ ਇੱਕ ਪੱਥਰ ਹੁੰਦਾ ਉਹ ਪਾਰਦਰਸ਼ੀ ਹੁੰਦਾ ਥੋੜਾ ਜਿਹਾ ਹਲਕਾ ਕਾਲਾ ਰੰਗ ਮਤੇ ਹੁੰਦੇ। ਨੇ ਠੰਡਾ ਰਹਿਣਾ ਹੋ। ਪਿੱਛੇ ਪੱਥਰ ਆਉਂਦੇ ਸੀ ਨਾ ਸ਼ੀਸ਼ੇ ਹੁਣ ਵੀ ਨੇ। ਨੇ ਐਨਕਲ। ਉਹ ਕਿਸਮ ਦਾ ਜਿਵੇਂ ਹੀਰਾ ਹੁੰਦਾ ਨਾ ਘਟਿਆ ਹੀਰੇ ਦਾ ਥੋ ਮਤਲਬ ਬੰਦਿਆ ਜਾਂਦਾ। ਉਹ ਹੈ ਕਮਾਊਂ ਦੇ ਇਲਾਕੇ ਵਿੱਚ ਮਿਲਦਾ ਹੋ ਜ਼ਿਆਦਾ। ਕਮਾਊਗੜ ਕਾਸ਼ੀਪੁਰ। ਕਮਾਊਗੜ ਕਾਸ਼ੀਪੁਰ ਦੇ ਇਲਾਕੇ ਚ ਪੱਥਰ ਮਿਲਦਾ ਜ਼ਿਆਦਾ। ਉਹ ਉਹਦੇ ਨਾਮ ਬਲਾਉਂਦੇ ਨੇ ਜੇ ਮੈਂ ਇਹਦੇ ਚਮਕਾ ਫਟਕੀ ਸੀ ਕੈਲਾਸ਼ ਕਮਾਊਗੜ ਕਾਂਸੀਪੁਰ ਹਾਂ ਉਹ ਫਟਕੋ ਉਹ ਪੱਥਰ ਦਾ ਨੂੰ ਪੱਥਰ ਦਾ ਨੂੰ ਫਟਕਾ ਹੈ ਉਹਦੇ ਵਿੱਚ ਦੀ ਪਾਰਦਰਸ਼ੀ ਹੁੰਦਾ ਅੱਖ ਦੀਦਾ ਬੇਦੀ ਕਮਾਊ ਕਾਸ਼ੀਪੁਰ ਦਾ ਹਲਾਕਾ ਸੀਸਾ ਸੀ ਸਰੰਗਾਵਾਲ ਕਾਸ਼ੀਪੁਰ ਆਪਣੇ ਸੀਸ਼ਾ ਸੀ ਸਰੰਗਾਵਾਲ ਨੀਕੇ ਸੋਹੀ ਤੇਰੀ ਸ਼ੀਸ਼ੇ ਨਾਲ ਬਲਾਉਂਦੇ ਨੇ ਸ਼ੀਸ਼ੇ ਦੇ ਵਿੱਚ ਜਿਵੇਂ ਆਪਾਂ ਨੂੰ ਫੋਟੋ ਦਿਹਿੰਦੀ ਹੈ ਸੀਸੇ ਚਮਕਦਾ ਵੀ ਉਹ ਫੋਟੋ ਵੀ ਹੁੰਦੀ ਆ ਪੋਪ ਬੋਗਰਵਾ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਾਢ ਇਹ ਕਿਤੇ ਕਿਤੇ ਸੋਭਾ ਦਿੱਤੀ ਆ ਸਾਰੀ ਇਕੱਠੀ ਕਰਕੇ ਗੁਰਬਾਣੀ ਚ ਇਕੱਠਾ ਹੀ ਰਖਦਾ ਸੀਸਾ ਸੀ ਸਰੰਗਾਂਬਾਦ ਬੜੀ ਸੋਭਾ ਸੋਹਣੀ ਸੁੰਦਰ ਸੋਭਾ ਨੂੰ ਨਿਕੜ ਕੇ ਬਣਾਈ ਹੈ ਸੀ ਹਿਮਾਲਾ ਹਰ ਹਾਰ ਸੀ ਹਲਬਾ ਨੇਰ हिमाਲਾ ਦੇ ਵਿੱਚ برفੇ برف ਹੁੰਦੀ ਹੈ ਉਹ ਕਹਿੰਦੇ ਨੇ ਵੀ ਐਸਾ ਹੀ ਚਾਹੀਦਾ ਆਦਮੀ ਦਾ ਮਨ ਜਦੋਂ ਜੰਮਿਆ ਹੋਇਆ ਜਦੋਂ برف ਜੰਮੀ ਹੋਈ ਹੈ ਥੱਲੇ ਇਹ ਨਾ ਸ਼ਾਂਤੀ ਰਹੇ ਅੰਦਰ ਪਾਣੀ ਹੈ ਹਿਮਾਲਾ ਤੇ ਖੜਾ ਹਿਲਦਾ ਹੀ ਨਹੀਂ ਥੱਲੇ ਰੁੜ ਜਾਂਦਾ ਜਾਂ ਪਾਣੀ ਵਾਲਾ ਰੁੜ ਜਾਊਗਾ ਜਦੋਂ ਜਰ برفਾ ਖੜੀ ਹੈ ਜੰਮੀ ਐ ਪਾਣੀ ਮਨ ਨੂੰ ਪਾ برف ਜਮਾ ਦੀ ਨਹੀਂ ਤਾਂ ਪਾਣੀ ਥੱਲੇ ਨੂੰ ਜਾਂਦਾ ਪੈਦਾ ਇਹ ਉਹਨਾਂ ਨੇ ਇਹ ਜੀ ਕਰ ਲਈ ਸੋਭਾ ਹਿਮਾਲਾ ਹਰ ਹਾਰਸੀ ਹਲਬਾ ਨੇਰ ਹਰ ਨਾਲ ਚਮਕਦਾ ਰਾਤ ਨੂੰ برف ਚਮਕਦੀ ਹੈ ਚਿੱਟੀ ਵੀ ਹੁੰਦੀ ਹੈ ਪਾਣੀ ਪਾਣੀ ਦਾ ਧਾਰ ਕਾਲੀ ਹੋ ਜਾਂਦੀ ਹੈ ਬੂਡੇ ਕਾਲੀ ਧਾਰ ਵਰ੍ਹਦੇ ਕੋ ਚਿੱਟੀ ਹੁੰਦੀ ਹੈ ਪਾਣੀ ਦਰਗਹੋਰ ਹੋ ਜਾਂਦਾ ਪਾਣੀ ਹੋਏ ਤੇ ਹਰ ਹਾਲ ਸੀ ਹਲਬਾ ਨੇਰ ਹਰ ਹਾਰਸੀ ਹਲਬਾ ਨੇਰ ਹਲਬਾ ਨੇਰ ਦੇ ਵਿੱਚ ਉੱਥੇ ਉੱਪਰ ਸ਼ਿਵਜੀ ਦਾ ਗਲਛ ਜਿਹੜਾ ਹਾਰ ਹੈ ਨਾ ਸੱਪ ਦਾ ਚਿੱਟੇ ਦਾ ਉਹਦੇ ਨਾਲ ਦਿੰਦੇ ਨੇ ਜਾ ਉਹ ਜਿਹੜੀ ਕਾਂਜੀ ਚਮਕਦੀ ਹੈ ਇਹੋ ਜੀ ਚਮਕ ਚਮਕੇ ਦੇਣੀ ਹੈ ਉਹਨਾਂ ਨੇ ਉਹ ਕਹਿੰਦਾ ਸ਼ਿਵਰੀ ਦੇ ਗੱਲ ਦਾ ਜਿਹੜਾ ਸੱਪ ਹੈ ਨਾ ਇਹ ਮਾਨ ਹੈ ਇਹ ਜਾਇ ਮਾਨ ਕੁਛ ਨਹੀਂ ਕਹਦਾ ਨਾ ਉਹਨੂੰ ਜਦੋਂ ਇਹ ਕੁਛ ਨਾ ਕਹੇ ਮਾਨ ਸੱਪ ਵੰਗੂ ਆਦਮੀ ਨੂੰ ਦੰਗ ਮਾਰਦਾ ਨਾ ਸੱਪ ਫਿਰ ਇਹ ਸੁਧਰ ਗਿਆ ਮਾਨ ਉਹ ਨਾਗੀ ਇੱਥੋਂ ਕਿਹਾ ਆਇਆ ਆਈ ਡੋਨਟ ਹਾਂ ਕਿ ਹੋਣਾ ਮਾਨੂੰ ਨੂੰ ਕਿਹਾ ਹੈ ਨਾ ਹੰਸ ਕੇ ਸੀ ਹਾਜੀਪੁਰ ਗਿਆ ਨਹੀਂ ਹੋਇਆ ਹਾਜੀਪੁਰ ਦੇ ਵਿੱਚ ਹੰਸਣਾ ਪਹਿਲਾਂ ਕੀਤੀ ਥੋੜੀਏ ਕਿਸ ਨੇ ਵਰਮਲ ਜੋ ਵੀ ਬੰਦੀ ਹੋਈ ਹੈ ਹਾਜੀਪੁਰ ਜਿਆਦਾ ਹੰਸਣ ਨਾਲ ਤੈਨੂੰ ਤਸ਼ਵੀਰ ਹੁੰਦੇ ਨੇ ਸੋ ਜੀ ਚੰਦਨ ਸੀ ਚੰਪਾ ਚੰਦਰਮਾਸੀ ਚੰਦਰਾਗਰ ਚੰਪਾਵਤੀ ਦੇ ਵਿੱਚ ਚੰਦਨ ਦੀ ਖੁਸ਼ਬੂ ਹੁੰਦੀ ਹੈ ਜਿਆਦਾ ਉਹਨਾਂ ਨੇ ਕਹੇ ਉਹ ਚੰਦਨ ਵਰਗਾ ਚੰਦਨ ਦੀ ਦੇਖੋ ਸਮੈਲ ਹੁੰਦੀ ਹੈ ਜਦੋਂ ਮਰਜੀ ਕਸਾਈ ਵੀ ਕਿਤੇ ਨਾ ਹੋਵੇ ਜੇ ਚੰਦਨ ਦੀ ਲੱਕੜੀ ਸਮਾਦੇ ਸਾਰੇ ਹੀ ਹੁੰਦੀ ਹੈ ਚੰਦਰਮਾਸੀ ਚੰਦਰਾਗਰ ਚੰਦਰਾਗਰ ਪਹਾੜ ਦੇ ਉੱਤੇ ਚੰਦਰਬਿਨਦਲ ਤੇ ਲੰਦਨ ਚੰਦਰਮੇ ਨੂੰ ਹੁਣ ਆਪਾਂ ਮਨ ਨੂੰ ਦੰਨੀ ਆ ਚਾਂਦਰੀ ਸੀ ਚਾਂਦਗੜ੍ਹ ਜੋਨ ਜੋਹੀਤ ਹਨ ਚਾਂਦਗੜ੍ਹ ਦੇ ਵਿੱਚ ਚੰਦਰਮੇ ਦੀ ਬਜਾਏ ਚਾਂਦਰੀ ਦੀ ਗੱਲ ਕਰਦੇ ਨੇ ਚੰਦਰਮੇ ਦੀ ਨਹੀਂ ਔਰ ਕਾਜੂ ਉਪਮਾ ਬਚੀ ਹੈ ਤਸਪਾਸ਼ਾ ਲਿਖਦੇ ਨੇ ਆਨੰਦ ਕੀ ਸਰਕੋਸ ਅਸੀਂ ਨਾਲ ਸਰ ਕਹਿੰਦੇ ਚੰਦਰਮੇ ਤੋਂ ਜਿਹੜੀ ਚਾਨਣੀ ਆ ਰਹੀ ਹੈ ਨਾ ਉਥੋਂ ਉਹੀ ਗੱਲ ਕਰਦਾ ਮੈਂ ਚੰਦਰਬਾਨ ਨੂੰ ਛੱਡ ਦੇ ਉਹ ਚੰਦਰਬਾਨ ਦੇ ਵਿੱਚ ਤਾਂ ਕੋਈ ਦੀਦ ਹੈ ਉਹਦਾ ਘਾਰਾ ਨੂੰ ਇਹੋ ਜੀ ਹੈ ਉਹਨੂੰ ਇਹੋ ਜੀ ਚੰਗੀ ਲੱਗਦੀ ਹੈ ਗੰਗਾ ਸਮ ਗੰਗ ਗੰਗਾ ਦੇ ਉੱਤੇ ਜਾ ਕੇ ਜਿਹੜੇ ਗੰਦਾ ਦੇ ਕਰਾ ਦੇ ਰਹੇ ਨੇ ਉਹ ਗੰਦਾ ਵਰਗੀ ਬੰਦੇ ਨੇ ਗੰਦਾ ਧਾਰ ਹੈ ਗੁਰਬਤ ਗਾਂਧੀ ਗੰਦਾ ਇਹ ਜੀ ਆਕਾਸ਼ ਚ ਉਤਰੀ ਹੈ ਦੇ ਵਿੱਚ ਬਕਾਨਸੀ ਬਲੰਦਾਬਾਦ ਬਕਾਲ ਵਰਗੀ ਹੈ ਕੀਰਤੀ ਤਿਹਾਰੀ ਕੀ ਉਜਿਆਰੀ ਸੋਹੀ ਕੀਰਤੀ ਦੀ ਉਜਿਆਰੀ ਇਹ ਜੀ ਥੋੜੀ ਲੱਗਦੀ ਹੈ ਫਰਾਸੀ ਫਿਰੰਗੀ ਫਰਾਂਸੀਸ ਕੇ ਦਰੰਗੀ ਫਰਾਂਸੀ ਫਰੰਗੀ ਜਣੇ ਰ ਯੁਰਬ ਦੇ ਦੇਹ ਵਾਲੇ ਯੁਰਬ ਦੇ ਪਰਾਸੀ ਫਰੰਗੀ ਫਰਾਂਸੀਸ ਕੇ ਦਰੰਗੀ ਫਰਾਂਸੀਸ ਫਰਾਂਸੀਸੀ اور ਦਰੰਗੀ ਮਕਰਾਨ ਮਕਰਾਨ ਕੇ ਮਰਦੰਗੀ ਬਰਦਾਨ ਦੇ ਰਹਿਣ ਵਾਲੇ ਬਰਦਗੀ ਤੇਰੇ ਗੀਤ ਗਾਇਤ ਹਨ ਸਾਰੇ ਤੇਰੇ ਗੀਤ ਗਾਉਂਦੇ ਤੈਨੂੰ ਸਾਰੇ ਤੇਰੇ ਗੀਤ ਗਾਉਂਦੇ ਨੇ ਆਪਣੀ ਆਪਣੀ ਭਾਸ਼ਾ ਚ ਚਾਹੇ ਉਹ ਹਾਂ ਇਹ ਪੌਣ ਕੇ ਆਹਾਰੀ ਤੇਰਾ ਤੇ ਆਇਆ ਤਾ ਉਹ ਵਿਚਾਰੇ ਪੌਣ ਆਹਾਰੀ ਹੋ ਰਹਿ ਕੇ ਨਾ ਧਿਆਨ ਲਾਉਂਦੇ ਉਹ ਤੇ ਪੌਣ ਆਹਾਰ ਦੀ ਜਿਆਦਾ ਹੈ ਵੀ ਜਿਹੜੇ ਉਹਦੇ ਕਹਿੰਦੇ ਮਤਲਬ ਪਦਾਰਥ ਸਮਗਰ ਘੱਟ ਭਜਦੇ ਸੀ ਹਾਂ ਪੂਰਵ ਕਾਮ ਰੂਪ ਕਮਾਓ ਪੂਰਬ ਪੂਰਬ ਪਲਾਉ ਪਲਾਉ ਆ ਪੂਰਬ ਦੇ ਜਿਹੜੇ ਪਲਾਉ ਨੇ ਕਾਮਰੂਪ ਉਹ ਕਮਾਉ ਉਹ ਦੇਰ ਕਾਮਰੂਪ ਕਾਮਰ ਰਖਣ ਵਾਲੇ ਕਮਾਉ ਕਮਾਉ ਦੇ ਕਮਾਉ ਹੈ ਨਾ ਪਹਾੜ ਸਰਬ ਠੌਰ ਮੈਂ ਵਿਰਾਜੇ ਜਹਾਂ ਜਹਾਂ ਜਾਇਆ ਤਹਾਂ ਸਾਰੇ ਕੰ ਜਿੱਥੇ ਆ ਸਾਰੇ ਲੋਕ ਜਿਹੜੇ ਤੇਰੇ ਨਾਲ ਜੁੜੇ ਹੋਏ ਨੇ ਜਿੱਥੇ ਵੀ ਜਾਂਦੇ ਆ ਤੇਰੇ ਗੀਤ ਸਾਰੇ ਗਾਉਂਦੇ ਇਹ ਨਹੀਂ ਹੈਗਾ ਵੀ ਆ ਤੇਰੇ ਬਰੋਦੀ ਦੇ ਬੰਦੇ ਦੀ ਤੇਰੇ ਨਾਲ ਸਾਰੇ ਜੁੜਦੀ ਗੱਲ ਕਰਦੇ ਪਰਮੇਸ਼ਰ ਤੋਂ ਕੋਈ ਮਤਲਬ ਹਾਂ ਉਹਨਾਂ ਦੀ ਮਤਭੇਦ ਹੋ ਸਕਦੇ ਨੇ ਅਪਸੂਚੀ ਸੋਚਣ ਦੇ ਮਤਭੇਦ ਹੈ ਪਰ ਤੈਨੂੰ ਸਾਰੇ ਬੁੱਧ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਪੂਰਨ ਪ੍ਰਤਾਪੀ ਹੈ ਤੂੰ ਜੰਤਰ ਮੰਤਰ ਦਾ ਤੈਨੂੰ ਕੋਈ ਚਿੰਤਾ ਨਹੀਂ ਤੈਨੂੰ ਕੋਈ ਬਸਤ ਕਰ ਲੂ ਜੰਤਰ ਮੰਤਰ ਨਾਲ ਨਾਦ ਕੀਰਤੀ ਤੇ ਹਾਜੀ ਕੋ ਪਾਈ ਹੈ ਹੇ ਨਾ ਤੇ ਤੇਰੀ ਕੀਰਤੀ ਦਾ ਕੋਈ ਪਾਰ ਨਹੀਂ ਪ ਸਕਦਾ ਕੀਰਤੀ ਸਾਰੇ ਹੀ ਕਰਦੇ ਨੇ ਤੇ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਪਿੰਡ ਫਿਰ ਤੋਂ ਹੈ ਤੇ ਤੇ ਤੇ ਤੁਮਰਾ ਲਖਨ ਜਾਏ ਪਸਾਰਾ ਕੇ ਸਜਾ ਪ੍ਰਥਮ ਕੇ ਕਾ ਰੂਪ ਰੂਪ ਸਰੂਪਾ ਰੰਗ ਪਿਓ ਰਾਵ ਕਹੀ ਪੂਪਾ ਇਸ ਤਰੀਕੇ ਨਾਲ ਇੱਥੇ ਉਹਦੀ ਵਿਆਖਿਆ ਹੀ ਕੀਤੀ ਹੈ ਇਹਨੂੰ ਗੰਦੀ ਇਹੋ ਗੱਲ ਹੈ ਨਾ ਉਹਦੀ ਆ ਵਿਆਖਿਆ ਹੀ ਹੈ ਇਹਦੇ ਵਿੱਚ ਐਂ ਦਾ ਹੋ ਉਹ ਪ੍ਰਸਾਦ ਪਾਦਲੀ ਛੰਦ ਹਾਂ ਅਦਵੈ ਅਨਾਥ ਅਦਵੈ ਰਾਧ ਆਸਨ ਅਡੋਲ ਅਦਵੈ ਅਨਾਥ ਜਿਹੜਾ ਹੈ ਹਾਂ ਅਦਵੈ ਅਨਾਥ ਆਸਨ ਅਡੋਲ ਉਹ ਦਵੈ ਹੈ ਜਿਹੜਾ ਇੱਕ ਹੁੰਦਾ ਨੇ ਕੋ ਉਹ ਦਵੈ ਉਹ ਦਵੈ ਤਰੀ ਉਹ ਜਾਂ ਦੋ ਆਪ ਹੈ ਤਾਂ ਦਵੈ ਤੇ ਹੁਣ ਜੇ ਨਾ ਜਰਾ ਆਪ ਦੋ ਦਵਾਈ ਦੋਨਾਂ ਚਰੇ ਆ ਗਦਾ ਵੀ ਕੋ ਗਿਆ ਫਿਰ ਬਸ ਫਿਰ ਉਹ ਸਮਝ ਲੈਂਦਾ ਵੀ ਇਹ ਦਵਾਈ ਤਾਂ ਉਹਨਾਂ ਸੀ ਇਹ ਦੋ ਰਿਹਾ ਇੱਕ ਹੋਏ ਨਹੀਂ ਤਾਂ ਦਵਾਈ ਇਹਨਾਂ ਦੇ ਵਿੱਚ ਇੱਕ ਨੂੰ ਸਮਝ ਆ ਜਾਂਦੀ ਹੈ ਨਾ ਵੀ ਮੇਰੇ ਜਿਹੜੀ ਦਵਾਈ ਸੀ ਤਾਂ ਸੀ ਉਹਦਾ ਕਾਰਨ ਕੀ ਸੀ ਦਵਾਈ ਦਾ ਕਾਰਨ ਤਾਂ ਹੈ ਆਪ ਦਾਲ ਆਪਣੀ ਮਤ ਆਪਣੇ ਨਾਲੇ ਨਹੀਂ ਮਿਲਦੀ ਆਪਣੇ ਅੰਦਰ ਦੇ ਦੋ ਮਤਨ ਜਾਂ ਕਹਿੰਦਾ ਸੜਕ ਪਾਰ ਕਰਨਾ ਕਰਨਾ ਕਰਾ ਹੁਣ ਬੱਤੇ ਕੋਈ ਇੱਕ ਦੋ ਹੋਈ ਦੋ ਹੋਗੀ ਸੜਕ ਪਾਰ ਕਰਾਂਗਾ ਨਾ ਕਰਾਂ ਬੱਤਲ ਨਹੀਂ ਆਪਣੀ ਦੋ ਹੋ ਗਈ ਬਾਣੀ ਨੂੰ ਬਣਾ ਕੇ ਨਾ ਮਨ ਨਾ ਬਤਾ ਆਪਣੀ ਦੋ ਇਹਦੇ ਅੰਦਰ ਆਪਣੇ ਅੰਦਰ ਦੋ ਬੁੱਤਾਂ ਨੇ ਸੱਚ ਇਹਨੂੰ ਦੁਆਇਤ ਕਹਿੰਦੇ ਨੇ ਜਨਾਜਰੇ ਅੰਦਰ ਦੋ ਨੇ ਉਹਨਾਂ ਜੋ ਦੁਆਇਤ ਰਹੂਗੀ ਅ ਜਿਹੜਾ ਇੱਕ ਹੋ ਜਾਊਗਾ ਮਾਤੇ ਇੱਕ ਹੋਊਗੀ ਉਹਦੀ ਫਿਰ ਅਦਵਾਇਆ ਅਨਾਸ ਅਦਵਾਇਆ ਦੋ ਇਹਦੀ ਇੱਕ ਹੋ ਗਿਆ ਅਨਾਸ ਜਿਹੜਾ ਅਦਵਾਇਆ ਉਹ ਹੀ ਅਨਾਸ ਹੈ ਉਹਦਾ ਨਾਮ ਨਹੀਂ ਹੁੰਦਾ ਆਸਨ ਅਦਸ ਕੱਤ ਤੱਕ ਹੁੰਦਾ ਜਿਹਨਾਂ ਨੇ ਦੋਨੇ ਉਹਦਾ ਜਨਾਸ ਹੁੰਦਾ ਨਾ ਜੋ ਉਪਜੇ ਉਹ ਬਨਸਾ ਹੈ ਜਿਹੜਾ ਉਪਜਿਆ ਨਾ ਬਨਸਾ ਉਹਨੇ ਬਨਸਾ ਜਨਾ ਚ ਉਹ ਬਨਸਾ ਨਹੀਂ ਕਹੁੰਦਾ ਨਹੀਂ ਜਿਹੜਾ ਜਿਹੜੇ ਕਰਨ ਉਹ ਤਾਂ ਉਹ ਬਿੰਸਲਾ ਤੋਂ ਨੇ ਹੈ ਨਾ ਤਾਂ ਉਹਦਾ ਹੁਣ ਜੋ ਉਪਜਿਆ ਦੂਜਾ ਬਣਿਆ ਉਹਦਾ ਨਾਂ ਸੁਣਾਈ ਹੁਣ ਇਸ ਕਰਕੇ ਉਹਨੂੰ ਨਾ ਉਹਨੂੰ ਮਾਰਨ ਵਾਸਤੇ ਇਹ ਗੁਰਬਾਨੀ ਹੈ ਗੁਰਬਾਨੀ ਹੈ ਬੰਨ ਮਾਰਿਆ ਹੋਰ ਪੈਦਾ ਜੋ ਹੋਇਆ ਆਸਨ ਅਡੋਲ ਆਸਨ ਅਡੋਲ ਜੇ ਇਹ ਆਪਨੀ ਵਾਰੂ ਤਾਂ ਉਹਨੂੰ ਫਿਰ ਕਾਲ ਦੀ ਲੋੜ ਤਾਂ ਫੈਲਦੀ ਮਾਰਨ ਦੀ ਦੇ ਤਾਂ ਮਰਦਾ ਕਿਵੇਂ ਹਾਂ ਬੂਆ ਕੌਣ ਮਾਰਿਆ ਕਹਿੰਦਾ ਮੈਂ ਮਾਰਿਆ ਬੂਆ ਹੋਬੇ ਮਾਰਿਆ ਮਾਰਿਆ ਕਿ ਨਾ ਮੈਂ ਮਾਰਿਆ ਹਾਂ ਬੂਆ ਮੈਂ ਮਾਰਿਆ ਹਾਂ ਬੂਆ ਮਾਰਿਆ ਕਿ ਨਾ ਮੈਂ ਮਾਰਿਆ ਆਪਣੇ ਆਪ ਨੂੰ ਆਪੇ ਮਾਰਨਾ ਆਪਣਾ ਆਪ ਆਪੇ ਖੜ ਸੇ ਬੇਸਤ ਗੱਲ ਤੇ ਵਾਲਾ ਨਹੀਂ ਕਰਦੇ ਪੈਦਾ ਵੀ ਆਪੇ ਕੀਤਾ ਆਪਣੇ ਆਪੇ ਹੋਇਆ ਮਾਰਨਾ ਵੀ ਇਹਨੇ ਆਪਣੇ ਆਪੇ ਪਾ ਗੁਰਬਾਨੀ ਦਾ ਇਹਨੂੰ ਆਪਣੇ ਆਪ ਮਰਨ ਦੀ ਫਿਤੀ ਦੱਸਦੀ ਹੈ ਉਹ ਵਿਦੇਸ਼ ਨਾਲ ਮਰਦਾ ਹੈ ਨੂੰ ਉਹ ਪਾਸਾ ਹੋਮੇ ਛੱਡ ਦੇਣੀ ਹੈ ਹੋਰ ਮਰਨਾ ਕੀ ਹੈ ਹੋਮੇ ਛੱਡਣੀ ਹੋਈ ਹੈ ਹੋ ਛੱਡਣ ਨੂੰ ਐ ਮੂਆ ਕਹਿੰਦੇ ਨੇ ਹੋਮੇ ਦਾਂਗ ਕੇ ਦਿਹਾ ਮੂਆ ਵਰਗੀ ਹੋਰ ਨਹੀਂ ਮਰਿਆ ਕੁਝ ਵੀ ਹੋਮੇ ਛੱਡਤੀ ਹਾਂ ਮੂਆ ਹੈ ਮੈਂ ਮਾਰੇ ਆਪਣੇ ਆਪੇ ਮਾਰੇ ਆਪਣੇ ਆਪ ਦਾ ਹੰਕਾਰ ਆਪਣੇ ਆਪ ਹੀ ਮਾਰ। ਆਸਣ ਅਡੋਲ। ਆਸਣ ਫਿਰ ਕੀ ਹੋ ਗਿਆ। ਮਾਇਆ ਨਾਲ ਜੁੜਿਆ ਆ ਕੇ ਕਰਕੇ। ਮਾਇਆ ਨਾਲ ਜੁੜਿਆ ਆ ਕੇ ਮਨ ਡੋਲਦਾ। ਮਨ ਮਾਇਆ ਜੋ ਡੋਲਦੀ ਹੈ। ਕਬੀਰ ਮਾਇਆ ਡੋਲਣੀ। ਜੁੜ ਜੇ ਟ੍ਰੇਨ ਚੱਲਦੀ ਹੈ ਵਿੱਚ ਬੈਠਿਆ ਉਹਦਾ ਉਹਨੇ ਚੱਲਣ ਆਇਆ ਨਾਲ ਟ੍ਰੇਨ ਦੇ ਪਛੜਿਆ। ਹਵਾਈ ਜਾ ਜਿ ਬੈਠਾ ਹੈ ਹਵਾਈ ਜਾ ਜੇ ਭਜਦਾ ਤਾਂ ਆਪ ਧਰਤੀ ਤੇ ਬੈਠਿਆ ਜੇ ਧਰਤੀ ਘੁਮਦੀ ਅਸੀਂ ਨਾਲੇ ਘੁਮਦੇ ਹਾਂ ਇਸ ਕਰਕੇ ਥੇਰ ਕੁਝ ਨਹੀਂ ਹੈ ਸੰਸਾਰ ਚ ਅਨੰਤ ਉਪਮਾ ਅਤੋਲ ਅਦਵਾਇ ਅਨੰਤ ਉਪਮਾ ਅਤੋਲ ਜਦੋਂ ਅਨੰਤ ਹੋ ਜਾਂਦਾ ਅਦਵਾਇ ਹੋ ਕੇ ਫਿਰ ਉਹਦੀ ਉਪਮਾ ਕੀ ਹੈ ਅਤੋਲ ਹਰ ਦਿਓ ਦੀ ਉਹ ਬੋਲ ਕੇ ਸਰ ਉਹ ਇੱਕ ਦੀ ਇੱਕ ਨਾਲੇ ਉਹ ਵਾਹ ਹੋਰ ਕਿਸੇ ਨੂੰ ਵਾਹ ਵੀ ਨਹੀਂ ਇੱਕ ਦੀ ਇੱਕ ਨਾਲੇ ਬਰਾਬਰੀ ਹੈ ਜੈਸਾ ਤੂੰ ਜੈਸਾ ਦਿੱਤੀ ਜਾ ਸਕਦੀ ਅਛਾਏ ਸਰੂਪ ਅਭਿਅਕਤ ਨਾਥ ਅਛਾਏ ਹੈ ਇੱਕ ਕੀ ਹੈ ਅਛਾਏ ਸਰੂਪ ਹੈ ਅਭਿਅਕਤ ਨਾਥ ਅਭਿਅਤ ਹੈ ਕਿਉਂਕਿ ਉਹ ਵਿਅਕਤੀ ਹੈ ਨਹੀਂ ਕੋਈ ਆਦਮੀ ਤਾਂ ਹੈ ਨਹੀਂ ਫਰਕ ਹੈ ਕਿ ਸੱਚਖੰਡ ਦੇ ਵਿੱਚ ਤਾਂ ਅਵਿਅਕਤ ਹੈ। ਇਹ ਤੇ ਤੇ ਵਿਅਕਤੀ ਹੁੰਦਾ ਹੋਇਆ ਅਵਿਅਕਤ। ਜਿਹੜਾ ਹਰ ਜਨਨ ਹਰ ਜਨਨ ਐਸਾ ਚਾਹੀਏ ਜੈਸਾ ਹਰੀ। ਹਰ ਕਾ ਸੇਵ ਕੋ ਸੋ ਹਰ ਜਿਆ ਭੇਦਣ ਜਾਣੋ ਮਾਨਸ ਦੇ। ਮਾਨਸ ਦੇ ਹੁੰਦੀ ਜ਼ਰੂਰ। ਪਰ ਉਹ ਵਣਦੇ ਹੁੰਦੇ ਹੋਏ ਵੀ ਵਣਦੇ ਨੂੰ ਬਣ ਰਲ ਜਾਈਦਾ ਕਹਿੰਦੇ ਉਹਦਾ ਪੇਸ ਮੰਨੋ ਨਾ ਹੁਣ ਜਿਹੜਾ ਤਾਂ ਇਸ ਰੂਪ ਦੇ ਵਿੱਚ ਹੈ ਕਿ ਦੇਹ ਹੈਗੀ ਉਹ ਖੜਗ ਉਹ ਗਿਆਨ ਖੜਗ ਆਪੇ ਆਪੇ ਭਗੋਤੀ ਹੈ ਉਹਨੂੰ ਬਰਤਣ ਵਾਲਾ ਜਿਹੜਾ ਹੈਗਾ ਸੱਜਖੰਡ ਹੁਕਮ ਸੱਜਖੰਡ ਦਾ ਉਹ ਹੱਥ ਹੈ ਉਹ ਉਹ ਹੁਕਮ ਦੇ ਹੱਥ ਵਿੱਚ ਐ ਨਾ ਖੜਗ ਵਰਤਨ ਵਾਲਾ ਕੋਲ ਵਰਤਨ ਵਾਲਾ ਕੋਈ ਆਦਮੀ ਨਹੀਂ ਹੈ ਸੱਚਖੰਦ ਦੀ ਮਰਜ਼ੀ ਨਾਲ ਵਰਤੁੰਦੀ ਐ ਸਾਰੀ ਤਲਵਾਰ ਉਹਦੀ ਮਰਜ਼ੀ ਹੁਕਮ ਉਹਦਾ ਸੱਚਖੰਦ ਦੀ ਮਰਜ਼ੀ ਨਾਲ ਚੱਲਦਾ ਉਹਦੇ ਹੱਥ 'ਚ ਕੀ ਐ ਉਹਦੇ ਹੱਥ 'ਚ ਉਹ ਤਾਂ ਸਾਰੀ ਉਹਦੀ ਮਰਜ਼ੀ ਨਾਲ ਚੱਲਦਾ ਸੱਚਖੰਦ ਦੀ ਨਾਲ ਪਰ ਉਹ ਮੰਨ ਵੀ ਚੱਲਦਾ ਮੈਂ ਦੋਵੇਂ ਵਿਚਾਰੇ ਮੰਨਦੇ ਨਹੀਂ ਦੋਹਾਂ ਨੂੰ ਦੀਦਾ ਨਹੀਂ ਉਹ ਕਮ ਹੋਕਮ ਦਾ ਹੱਥ ਉਹ ਗਾਮ ਖੜ ਗਿਆ ਜਿਉ ਤੂੰ ਚਲਾਇ ਚੱਲਾਂ ਸੋਮੀ ਸੋਮੀ ਜੇ ਮੈਂ ਚਰਾਉਂਦਾ ਤਲਵਾਰ ਜਲਦੀ ਸੋ ਤਲਵਾਰ ਦੇ ਅੱਗੇ ਕੁਛ ਨਹੀਂ ਕੁਛ ਨਹੀਂ ਇਹਦਾ ਗੁੱਸਾ ਜਿਹੜਾ ਕਰਦੇ ਨੇ ਉਹ ਪਰਮੇਸ਼ਰ ਦਾ ਗੁੱਸਾ ਕਰਦੇ ਨੇ ਜਿਹੜਾ ਇਹਦਾ ਵਿਰੋਧ ਕਰਦੇ ਨੇ ਉਹ ਪਰਮੇਸ਼ਰ ਦਾ ਵਿਰੋਧ ਕਰਦੇ ਨੇ ਤਲਵਾਰ ਵਿਚਾਰੀ ਕੀ ਜਦ ਨੂੰ ਮਰਹੀ ਚਲਾ ਦਿਆ ਉਦਾ ਹੱਥ ਦੀ ਗੱਲ ਐ ਨਾ ਕਿੰਧਰੋਂ ਚਲਾਉਂਦਾ ਹੋ ਚਲਾਉਣ ਵਾਲੇ ਦੀ ਗੱਲ ਕਰੋ ਤੁਸੀਂ ਚੱਲਣ ਵਾਲੇ ਦੀ ਗੱਲ ਨਾ ਕਰੋ ਇਸ ਕਰਕੇ ਪਕਤਾਨੀ ਗੱਲ ਨਹੀਂ ਪਕਤਾ ਦੀ ਗੱਲ ਨਹੀਂ ਕੁਝ ਵੀ ਹੁੰਦੀ ਪਕਤ ਨਹੀਂ ਕੁਝ ਵੀ ਹੁੰਦੇ ਆਪ ਉਹ ਦਨਯੋ ਕੈਨ ਨਹੀਂ ਸੀ ਕੁਝ ਨਹੀਂ ਵੈਨ ਨਹੀਂ ਕੁਝ ਹੋਰ ਹੀ ਅਸੀਂ ਫੇਰਦੀ ਛੱਡਦੇ ਕਹਿੰਦੇ ਅਸੀਂ ਰੋਲਾ ਪਾਇਆ ਗੁਰੂ ਆ ਫਲਾਣਾ ਟਿਪਕ ਆਪ ਨਹੀਂ ਨਾ ਪਤਾ ਕਾਸੇ ਦਾ ਜਿੱਦਾਂ ਖਲਦੀ ਹੋਵੇ ਸਮਝੇ ਵੇਤਾ ਨਾ ਕਹਿਣ ਪੱਟਾ ਨੇ ਸਹੀ ਨਹੀਂ ਕਿਹਾ ਜਿਹੜਾ ਕੋ ਪੱਟਾ ਨੇ ਕਿਹਾ ਦੇ ਅਰਥ ਗਲਤ ਲਾਇਏ ਨੇ ਲੋਕਾਂ ਨੇ ਜਾਣ ਬੁੱਝ ਕੇ ਜਿਹੜੇ ਸੰਤਾਂ ਨੇ ਹੋਰ ਬਹੁਤ ਕੁਝ ਕਿਹਾ ਹੋਇਆ ਸੀ ਉਹਨਾਂ ਨੇ ਉਹਨਾਂ ਦੀ ਬੱਤ ਸਾਰੀ ਉਹ ਕੁਝ ਪੈਂਦੀ ਸੀ ਆਪਣੀ ਬੱਤ ਬਚਾਉਣ ਵਾਸਤੇ ਅਰਥ ਬਗਾੜੇ ਨੇ ਸੀ ਇਹਨੇ ਅਰਥ ਕੀਤਾ ਨਾ ਇਹਦੂ ਬੱਤ ਨੂੰ ਬਚਾਉਣ ਵਾਸਤੇ ਕੀਤਾ ਉਹ ਹੁਕਮ ਹਾਥ ਹੈ ਜਿਉ ਤੋਂ ਚਲਾਇਆ ਤੇ ਮੈਂ ਚੱਲਾ ਕਹਿਤਾ ਫਿਰ ਤੁਸੀਂ ਕਹੋਣਾ ਕੀ ਚਲਦੇ ਸੀ ਹੋਰ ਕੀ ਰਹਿ ਕੀ ਗਿਆ ਸੀ ਕਹਿੰਦੇ ਉਹ ਦਸਣਾ ਚੀਜ਼ ਰਹਿ ਗਈ ਸੀ ਉਹੀ ਗੁਰਬਾਨੀ ਚੋਂ ਸਾਬਤ ਕਰ ਦਿੰਦੇ ਆ ਇਹ ਲਿਖੀ ਪਈ ਹੈ ਪਰ ਇਹਦਾ ਭਾਲਦੇ ਨੇ ਸੂਈ ਜਿਨਾਂ ਨੱਕਾ ਵੀ ਕੋਈ ਐਸੀ ਗਲਤੀ ਸਾਨੂੰ ਮਿਲੇ ਬ੍ਰਿਧੀ ਜੁਲਦੀ ਜਿੱਥੋਂ ਅਸੀਂ ਸਾਰਾ ਕੁਝ ਕਰਕੇ ਫਿਰ ਆਪਣੀ ਬਰਬਤ ਸ਼ੁਰੂ ਕਰ ਦਿੱਤੀ ਇਹਦਾ ਜਰਾ ਅਗਰਾਵਾਲਦੇ ਲੋਕ ਗਲਤ ਅਰਥ ਕਰਕੇ ਨਾ ਇੱਕ ਨੁਕਤੇ ਦੇ ਟੋੜ ਬਰੋੜ ਕੇ ਹੋਰ ਯਾਰ ਸਾਰੇ ਸਾਰੀ ਬਣੀ ਦੇ ਜਣ ਦੇਖੀ ਕਰ ਦੋ ਤੂੰ ਆ ਜਾਣ ਬਾਹ ਸਰਬਾ ਪਰਮਾਤ ਆ ਜਾਣ ਬਾਹ ਹੂੰ ਸਰਬਾ ਪਰਮਾਤ ਸਰਬਾ ਪਰਮਾਤ ਆ ਜਾਣ ਬਾਹ ਬਾਘੜੀਏ ਦੀਦੇ ਦਨੂ ਬਾਹ ਕਿਸ ਨੂੰ ਹੁਕਮ ਦਾ ਹੱਥ ਦੀਨੇ ਬਾਹ ਦਾ ਦੀਦੀ ਵੀ ਇਹੜੀ ਚਲਾਉਂਦੀ ਏ ਓ ਬਾਣੀ ਦੀ ਦੀ ਅਡੋਰ ਨੀਤੀ ਦੀ ਜਿਹੜੀ ਪਾਈ ਹੋਈ ਆ ਇਹਦੇ ਸਰਬਾ ਪਰਮਾਤਮਾ ਕਹੇ ਜਨ ਖਿੱਚੇ ਤਾਂ ਜਾਈਏ ਕਬੀਰ ਕਹਿੰਦਾ ਹੁ ਕੋਕਰ ਰਾਮ ਕੋ ਬੁਤਿਆ ਮੇਰਾ ਲੋ ਗੜੇ ਹਮਾਰੇ ਜੇਬੜੀ ਜਨ ਖਿੱਚੇ ਤਾਂ ਕਰ ਦਿੰਦਾ ਉਧਰ ਹੀ ਬੋਲਣ ਲੱਗ ਜਾਂਦਾ ਓਹੀ ਓ ਇਧਰ ਮੂੰਹ ਕਵਾ ਦਿੰਦਾ ਵੀ ਇਧਰ ਵੀ ਕਹਿੰਦੇ ਕੁਛ ਆ ਉਹ ਦਿਖਾ ਦਿੰਦਾ ਜੋ ਦਿਖ ਸੋ ਬੋਲਨੇ ਜੋ ਪੇਖੇ ਜੋ ਮੂੰਹ ਕਰ ਦਿੰਦਾ ਜੋ ਦੇਖ ਉਹ ਦੱਸ ਦਿੰਦਾ ਉਹ ਦਿਖਾ ਕਿਉਂ ਰਿਹਾ ਹੋ? ਉਹ ਇਹ ਕੀ ਜਾਲੂਨ ਵੀ ਕੀ ਗੱਲ ਹੈ? ਕਬੀਰ ਕੁਛ ਕਹਿ ਗਿਆ। ਸਮਝੇ ਕੌਣ? ਸਮਝੇ ਤਾਂ ਕੌਣ ਦੂਆ ਕਬੀਰ ਹੋਵੇ ਤਾਂ ਸਮਝੇ। ਬ੍ਰਹਮ ਗਿਆਨੀ ਕੀ ਖਤ? ਬ੍ਰਹਮ ਗਿਆਨੀ ਜਾਣ। ਸਰਬਾ ਪਰਮਾਤ ਸਰਬਾ ਪਰਮਾਤ ਗੱਲ ਕੀ ਹੈ ਹੋ? ਕਿਉਂ ਕਰਦਾ ਉਹ ਪਰਮਾਰਥ ਕਰਨਾ ਪਰਮਾਰਥ ਹੈ ਸਾਰਾ ਇਹਦਾ। ਉਨੇ ਹੋਰ ਕੁਝ ਨਹੀਂ ਕਰ ਦੋ ਉਹਦਾ ਪਰਮਾਰਥ ਵਾਸਤੇ ਚਲਦੀ ਹੈ ਤਲਵਾਰ ਉਹ ਕਹਿੰਦਾ ਮੇਰੇ ਖਿਲਾਫ ਚਲਦੀ ਹੈ ਉਹ ਤੇਰੇ ਖਿਲਾਫ ਪਰਮਾਰਥ ਜਹੂ ਤੇਰੇ ਖਿਲਾਫ ਹੂ ਸਰਬਾ ਪਰਮਾਰਥ ਕਿਸ ਦੇ ਖਿਲਾਫ ਹੁੰਦਾ ਹੈ ਜੇ ਸਰਬਾ ਪਰਮਾਰਥ ਜਿਹਦਾ ਲਾਉਂਦੇ ਸਰਬਾ ਪਰਮਾਰਥ ਹਰੇਕ ਦਾ ਪਰਮਾਰਥ ਹੀ ਕਰਨਾ ਹੈ ਭਲਾਈ ਕਰਨਾ ਸਦਾ ਬੁਰੇ ਦਾ ਵੀ ਭਲਾਈ ਕਰਨਾ ਉਹ ਕਿਸ ਖਿਲਾਫ ਹੋਊ ਖਿਲਾਫ ਹੋ ਪੁੱਠੀ-ਪੁੱਠੀ ਵਾਲਿਆਂ ਦੇ ਜਿਹਨਾਂ ਦੀ ਵੱਤ ਪੁੱਠੀ ਆ ਨਾ ਉਹ ਉਹ ਸਮਝਦੇ ਨੇ ਖਿਲਾਫ ਹੈ ਸਾਡੇ ਖਿਲਾਫ ਰਹੀ ਹੈਗੀ ਉਹਨਾਂ ਨੇ ਕੋਈ ਸਮਝਦੇ ਬੇਸਮਝ ਹੋਵੇ ਤਾਂ ਉਹਦਾ ਕੀ ਇਲਾਜ ਕੀ ਹੈ ਇਹੀ ਸਮਝਿਆ ਜਦ ਵੀ ਸੰਸਾਰ ਨੇ ਕਿ ਸੰਸਾਰ ਦੀ ਸੋਚ ਭਗਤਾਂ ਦੀ ਸੋਚ ਤੋਂ ਉਲਟਾ ਹੈ ਉਹ ਆਪਣੇ ਖਿਲਾਫ ਸਮਝਦੇ ਨੇ ਉਹ ਸਰਵਪਰਮਾਰਥ ਪਰਮੇਸ਼ਰ ਦਾ ਹੁਕਮ ਹੈ ਸਰਵਪਰਮਾਰਥ ਹੈ ਪਰਮੇਸ਼ਰ ਦਾ ਕਹਿਆ ਸਰਬ ਪਰਮਾਰਸ ਹੈ ਤੂੰ ਹੀ ਕਹਿ ਰਿਹਾ ਸਾਡੇ ਖਿਲਾਫ ਹੈ ਪਰਮੇਸ਼ਰ ਦੀ ਗੱਲ ਤੁਸੀਂ ਮੰਨਦੇ ਕਦੋਂ ਜੇ ਪਰਮੇਸ਼ਰ ਦੀ ਉਹ ਨਹੀਂ ਅਸੀਂ ਮੰਨਦੇ ਆਦਮੀ ਮਹੀਪ ਬਣਤਨ ਪਰਹੁਲ ਜਾਈ ਜਿੱਥੇ ਕਿਤੇ ਵੀ ਦੇਖ ਲੋ ਇੱਥੇ ਉੱਥੇ ਉਹਦਾ ਹੀ ਰਾਜ ਹੈ ਕਿਤੇ ਵੀ ਉਹਦੇ ਹੁਕਮ ਤੇ ਮਰਾਨੀ ਪਤਾ ਚੱਲਦਾ ਬਣਤਨ ਦੇ ਵਿੱਚ ਜਿਹੜੇ ਫੁੱਲ ਖਿੜਦੇ ਨੇ ਪਰਫੁੱਲ ਦੋਏ ਨੇ ਕਾਦੇ ਆਸਰੇ ਹੋਏ ਉਹਦੇ ਹੁਕਮ ਸੋਭਾ ਬਸੰਤ ਜਹਤੈਮ ਪਰਡੁੱਲ ਸਾਰੇ ਉਹਦੀ ਸੋਭਾ ਚਲਦੀ ਹੈ ਸੋਭਾ ਬਸੰਤ ਪੈਂਦੀ ਹੈ ਸੋਭਾ ਉਹਦੀ ਸੋਭਾ ਬਸੰਤ ਜਹਤੈਮ ਪਰਡੁੱਲ ਉਹ ਜੋ ਬਦੌਤ ਦੀ ਉਛਲਦੀ ਉਹਦੀ ਹਰ ਜਗ੍ਹਾ ਬਣਤਨ ਦੁਰੰਧ ਖਗ ਮਿਰਗ ਮਹਾਨ ਬਣਤਨ ਦੇਖ ਲੋ ਬਣ ਦੇਖ ਲੋ ਤਣ ਤਣਕਾ ਦੇਖ ਲੋ ਮਿਰਗ ਦੇਖ ਲੋ ਮਿਰਗ ਮਹਾਨ ਖਗ ਪੰਛੀ ਦੇਖ ਲੋ ਸਾਰਿਆਂ ਦੇ ਵਿੱਚ ਉਸੇ ਦੀ ਸੁਪਾ ਉਹਦੇ ਨਾਲੇ ਸਾਰੇ ਪੰਛੀ ਉੱਡੇ ਫਿਰਦੇ ਨੇ ਆदमी ਉਹ ਡੁੱਡੂ ਦਰਸਦਾ ਸਭ ਉਹdio ਸਭ ਆਇਆ ਹੁਣ ਉਹਨੇ ਉਹ ਸਾਰੇ ਕਰਾਮਾਤ ਉਹਦੀ ਕਰਾਮਾਤ ਆ ਸਭ ਉਹਦੀ ਤਾਣਾ ਜਹ ਤਾਏ ਪਰ ਫੁੱਲ ਜਹ ਸੁੰਦਰ ਸੁਜਾਨ ਜਿੱਥੇ ਫੁੱਲ ਖੜੇ ਹੋਏ ਨੇ ਜਿੱਥੇ ਵੀ ਪਰ ਫੁੱਲ ਸੁੰਦਰ ਸੁਜਾਨ ਸੁੰਦਰਤਾ ਹੈ ਇਸਾ ਉਹਦੀ ਜਾਣਕਾਰੀ ਉਹ ਸਭ ਜਾਣਦਾ ਉਹਨੇ ਤੰਗ ਕੀਤਾ ਸਭ ਨੂੰ ਸਮਝ ਆ ਇਹ ਉਹਦਾ ਬਣਾਇਆ ਹੋਇਆ ਹੱਥ ਵੀ ਬਣਾ ਕੇ ਦਿਖਾਵੇ ਕਿਵੇਂ ਬਣਾਉਂਦੇ ਸਭ ਦੀ ਜਾਣਕਾਰੀ ਖੁਦ ਬਣਾਉਣ ਵਾਲਾ ਹੈ ਸਭ ਚੀਜ਼ ਉਹ ਜਹਤਾ ਸੁਜਾਨ ਫੁੱਲ ਤੰਗ ਪਰ ਫੁੱਲ ਵੀ ਖਿੰਦੇ ਨੇ ਹੁੱਲੀ ਕਰਦਾ ਲਾਲਹੰਤ ਮੋਰ ਬੋਲ ਜਿਹੜਾ ਹੈਗਾ ਲਾਲਹੰਤ ਮੋਰ ਲੈ ਲੈ ਕਰਦਾ ਫੁਲੰਤ ਪਰ ਫੁੱਲ ਲਾਲਹੰਤ ਮੋਰ ਮੋਰ ਮੋਲਕ ਮੋਰ ਮੋਰ ਮੋਰ ਹਾਂ ਲਾਲਹੰਤ ਕੁਲੰਤਮ ਪਰਵਲੰਗ ਲੈਲੈਂਤ ਮੌਰ ਮੌਰ ਮੌਰ ਬਾਲ ਨੂੰ ਕਹਿੰਦੇ ਨਾ ਜੋ ਜਿਵੇਂ ਅਮਰੂ ਜਿਹੜਾ ਪੂਰਾ ਹੁੰਦਾ ਨਾ ਪੂਰ ਮੌਰ ਦੇ ਉਹ ਬੋਲਿਆ ਉਹ ਬੋਲ ਤੋਂ ਫੁੱਲ ਤੋਂ ਪਹਿਲਾਂ ਨਾ ਉਹ ਵਿਚ ਉਹ ਲੈ ਲੈ ਕਰਦਾ ਉਹਦੇ ਵਿਚ ਕਿਹੋ ਤੋਂ ਪਹਿਲਾਂ ਉਹਦੀ ਚੰਗ ਕਪੱਤਿਆਂ ਚ ਹੁੰਦੀ ਬੋਲ ਬੋਲੀ ਧਰਤੀ ਬੋਲੀ ਆਕਾਸ਼ ਸਿਰ ਟੁਰੇ ਕੁਝ ਵਿੱਚੋਂ ਪੈਦਾ ਹੋਣਾ ਉਹਦੇ ਵਿੱਚੋਂ ਕੁਝ ਵਿੱਚੋਂ ਨਿਕਲ ਲੈ ਲੈ ਹਣ ਜਾਨ ਮਨ ਮਥੇ ਚਾਉ ਜਿਹੜੇ ਆਦਮੀ ਦੇ ਵਿੱਚੋਂ ਕੁਝ ਪ੍ਰਗਟ ਹੋਣਾ ਉਹਦਾ ਜਿਹੜਾ ਪਰਫੁੱਲਤ ਹੁੰਦਾ ਪਹਿਲਾਂ ਉਹਦਾ ਮਨ ਜਿਹੜਾ ਦਰਾ ਹੈ ਖੜਦਾ ਹੈ ਖੜਦਾ ਉਹ ਮਨ ਖੜਿਆ ਹਰਿਆ ਉਬ ਵੀ ਖੜਦਾ ਹਰਦਾ ਵੀ ਖੜਦਾ ਕਰਦਾ ਚੇਰਾ ਆ ਜਾ ਜੇੜਾੜ ਹੂੰ ਜਦੋਂ ਬਾਰਿਸ਼ ਹੁੰਦੀ ਹੈ ਫਿਰ ਤਾਂ ਸਾਰੇ ਲੈ ਲੈ ਕਰਦੇ ਸਹੀ ਸਿਰ ਟੁਰੇ ਜਾਨ ਮਨ ਮਥੇ ਚੌਰ ਐ ਸਮਝ ਲਓ ਸਿਰ ਦੇ ਉੱਤੇ ਤਾਜ ਆ ਚੌਰ ਟਲ ਰਿਹਾ ਉਹਦੇ ਬਰੇ ਅਗਾ ਗੁਰਹਾਤ ਰਿਓ ਮੇਰੇ ਮਾਥੇ ਗਰੀਬ ਨਿਵਾਜ ਹੁਸੈਨਾ ਮੇਰੇ ਮਾਥੇ ਛਤਰ ਤੱਕ ਜੇ ਕਿਸੇ ਦੇ ਮਥੇ ਤੇ ਛਤਰ ਹੋਵੇ ਧਰਿਆ ਹੋਇਆ ਸੁਨਸਾਰੀ ਰਾਜੇ ਵੀ ਕੀ ਉਹ ਸੋਚ ਬੈਠਾ ਹੁੰਦਾ ਹੈ ਬੈਠਾ ਹੂਗਾ ਹੋ ਉਹ ਤਾਂ हां छत ਨੂੰ ਖਤਰਾ ਹੋਵੇ ਜਾਂ ਛਤਲ ਦੀ ਇੱਛਾ ਹੋਵੇ ਪਹਿਲਾਂ ਮਿਲੂ ਕ ਨਹੀਂ ਮਿਲੂ ਉਹ ਨਾ ਚਰਤਾ ਹੈ ਕੁਝ ਹੋਰ ਉਹ ਰਚਤਾ ਚਿੰਤਾ ਦੀ ਗੱਲ ਵੀ ਹੋਊਗੀ ਪਰ ਦੇਖੋ ਨਾ ਜਦ ਜਦ ਸੁਦੋਗਣੀਆਂ ਖੁੱਲਦੀਆਂ ਨਹੀਂ ਖੁੱਲ ਕੇ ਜਿੱਤ ਜਾਂਦਾ ਉਹ ਚੰਦਾ ਮੋਕੇ ਖੁਸ਼ੀ ਹੋ ਜਾਂਦੀ ਹੈ ਫਿਰ ਬੇਸਤੀ ਦੀ ਚੰਤਾ ਵਾਹ ਜਾਂਦੀ ਹੈ ਜਦ ਬੇਸਤੀ ਵੱਡ ਜਾਂਦੀ ਹੈ ਫਿਰ ਫਿਰ ਹੋਰ ਖੜ ਜਾਂਦਾ ਇਹ ਤਾਂ ਹੈ ਨਾ ਜੋ ਜੋ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਕੁਦਰਤ ਕਮਾਲ ਰਾਜਕ ਰਹੀਮ ਕੁਦਰਤ ਕਮਾਲ ਰਾਜਕ ਰਹੀਮ ਕੁਦਰਤ ਦਾ ਕਮਾਲ ਹੈ ਇਹ ਜਿਹੜਾ ਸਾਰਿਆਂ ਨੂੰ ਰਹਿਮ ਕਰਦਾ ਔਰ ਸਾਰਿਆਂ ਨੂੰ ਰਿਜਕ ਦਿੰਦਾ ਹੈ ਤਾਂ ਕੁਦਰਤ ਦਾ ਕਮਾਲ ਹੈ ਰਾਜਕ ਰਹੀਮ ਦੇਖੋ ਸਾਰਿਆਂ ਨੂੰ ਰਿਜਕ ਮਿਲ ਜਾਂਦਾ ਸਾਰਿਆਂ ਦੇ ਉੱਤੇ ਰਹਿਮ ਕਰਨਾ ਨਿਧਾਨ ਕਾਮਲ ਕਰੀਮ ਇਸੇ ਕਰਕੇ ਉਹਨੂੰ ਕਰਣਾ ਨਿਧਾਨ ਕਹਿੰਦੇ ਸਨ ਕਾਬਲ ਹੈ ਕਰੀਬ ਉਹ ਕਾਬਲ ਆ ਸਭ ਨੂੰ ਰਿਜਕ ਦੇਣ ਦੇ ਹਰ ਜਗ੍ਹਾ ਪਚੌੜ ਦੇ ਇੱਕ ਸਕਿਲਟੀ ਚ ਸਾਰੇ ਨੂੰ ਰਿਜਕ ਪਹੁੰਚ ਬਲੋਗ ਤਹ ਤਹ ਪਰਸੋ ਦੇਖੋ ਜਿੱਥੇ ਜਿੱਥੇ ਵੀ ਲਗਾ ਜਾਂਦੀ ਹੈ ਤਹ ਤਹ ਪਰਸੋ ਉਹਦੀਓ ਸੋ ਹੈ ਉਹਦੀਓ ਸੋ ਹੈ ਅਜਾਨ ਕਿਤੇ ਵੀ ਹੱਥ ਜਿਹੜਾ ਹੈਗਾ ਨਾ ਨજર ਨਹੀਂ ਹੁੰਦਾ ਪਰ ਹੱਥ ਹੁੰਦਾ ਹੀ ਸਾਰਿਆਂ ਨੂੰ ਸਾਰਿਆਂ ਨੂੰ ਦੇਖੋ ਉਹਦਾ ਹੁਕਮ ਜਿਹੜਾ ਹੈਗਾ ਨજર ਕਿਤੇ ਨਹੀਂ ਹੁੰਦਾ ਪਰ ਕੰਮ ਸਾਰਾ ਹੁੰਦਾ ਕਰਾਂ ਬਾਤਾਂ ਉਸੇ ਦੀਆਂ ਸਾਰੀਆਂ ਪਰ ਉਹਦਾ ਹੱਥ ਕਿਤੇ ਨજર ਬਾਹ ਮਤੋਜ ਅਸੀਂ ਅਣ ਜਾਣ ਤੇ ਤੇ ਸੰਸਾਰ ਅਜਾਣ ਸੰਸਾਰ ਨਹੀਂ ਜਾਣਦਾ ਸੰਸਾਰ ਨਹੀਂ ਜਾਣਦਾ ਤਾਂ ਕਹਿੰਦਾ ਮੈਂ ਨਾ ਮਾ ਤਾਂ ਲੋਲੇ ਭੁੱਖੇ ਮਰ ਜਾਣਗੇ ਉਹ ਨੂੰ ਤਾਂ ਅਸੀਂ ਤਾਂ ਐ ਕਹਨੇ ਆ ਕਰਦਾ ਮੈਂ ਕਰਦਾ ਆ ਕਰਦਾ ਉਹ ਨਹੀਂ ਕਰਦਾ ਇਹ ਕਿਉਂ ਹੈ ਕੋ ਕੋ ਆਪ ਨਹੀਂ ਦਿੰਦਾ ਨਹੀਂ ਗੁਪਤਰ ਰੋਸਨ ਬ੍ਰਹਤ ਕਰਨਾ ਨਿਦਾਨ ਰੋਸਨ ਬ੍ਰਹਤ ਗੁੱਸਾ ਦੀ ਕਿਸ ਤਰ੍ਹਾਂ ਆਉਂਦਾ ਉਹਨੂੰ ਰੋਸਨ ਬ੍ਰਹਤ ਕਰਨਾ ਨਿਦਾਨ कल्लाना दा मालिक रोज नहीं किसे ते करता गुस्सा नहीं होता किसे ते चाहे कोई नुकसान भी करता है नुकसान करता है उण कैसे दी फसल है, है कोई कोई दुश्मनी जग लाया है ओए त नुकसान है पाड़े की नहीं त तेरे की देता त तेरे पाया त ता तेरी ताली त ता तेरी फसल लती ਪਾਣੀ ਵੀ ਖਰਚਾ ਹੋਇਆ ਪਾਣੀ ਵੀ ਉਹਦਾ ਹੀ ਦਿੱਤਾ ਹੋਇਆ ਵੀ ਉਹਨੇ ਪਾਇਆ ਸੀ ਧਰਤੀ ਜਿਗਿਆ ਚ ਹੈ ਜਿਹੜੀ ਉਹਦਾ ਤਾਂ ਬਹੁਤ ਸਾਨੂੰ ਹੈ ਨਾ ਉਹਦਾ ਫਿਰ ਵੀ ਰੋਜ਼ ਕਰਦਾ ਉਹ ਤੇ ਇਸ ਕਰਕੇ ਰੋਸਿਤ ਰਹਿੰਦਾ ਪ੍ਰਫੁੱਲ ਖੁਸ਼ ਰਹਿੰਦਾ ਪ੍ਰਫੁੱਲੋ ਤਰਾਂ ਬਣਤਨ ਮਹੀਪ ਜਲਥਲ ਜਿੱਥੇ ਵੀ ਉਹਦੀ ਦੇਖਤੇ ਆ ਤੇ ਤੇ ਤੇ ਵੀ ਦੋ ਜਰ ਹੁੰਦੇ ਹੈ ਉਹ ਸਭੋਂ ਸਾਰਿਆਂ ਦੇ ਵਿੱਚ ਖੁਸ਼ੀ ਖੜੇ ਹੀ ਬਣਦਾ ਉਹ ਫੇਰ ਵੀ ਸਾਰਿਆਂ ਦੇ ਵਿੱਚ ਉਹ ਆਪਣਾ ਕੰਮ ਕਰ ਜਾਂਦਾ ਉਸੇ ਹਿਸਾਬ ਨਾਲ ਇੱਥੇ ਕੀ ਹੋ ਜਾਂਦਾ ਕੀ ਨਹੀਂ ਹੋ ਜਾਂਦਾ ਉਹਦੇ علاوہ ਉਹ ਆਪਣਾ ਕੰਮ ਉਹ ਵੀ ਕਰ ਹੀ ਜਾਂਦਾ ਬਣਤਨ ਮਹੀਪ ਚਲਤਨ ਮਹਾਨ ਬਣਤਨ ਬਣਤ੍ਰਣ ਮਹੀਪ ਜਲਤਨ ਮਹਾਨ ਬਾਰਣਾ ਔਰ ਟਿੜ ਟਿੜ ਹੁੰਦਾ ਫਰੀਕ ਤੋਂ ਬਰੀਕਾ ਟਿੜਕਾ ਬੜ ਹੁੰਦਾ ਵੱਡਾ ਦਰਖਤ ਮਹੀਬ ਜਲਥਲ ਮਹਾਨ ਸਾਰਿਆਂ ਦਾ ਮਾਲਕ ਸਾਰਿਆਂ ਦਾ ਕਰਨਾ ਨਿਧਾਨ ਕਰਨਾ ਦਾੰ ਦੀ ਹੀ ਸਮਝ ਲੋ ਹਰ ਜਗ੍ਹਾ ਮੇਹਰਦਾ ਸਿਰ ਤੇ ਉਹ ਉਹਦਾ ਹੀ ਕਰਾਂ ਬਾਤ ਉਹਦੀ ਉਹਦੀ ਹੀ ਕਿਰਪਾ ਦਾ ਕਰਕੇ ਸਭ ਕੁਝ ਹਰ ਰਿਹਾ ਜਗਮਗਤ ਤੇਜਪੂਰ ਨੂੰ ਪ੍ਰਤਾਪ ਜਗਮਗਤ ਤੇਜਪੂਰ ਨੂੰ ਪ੍ਰਤਾਪ ਉਹਦਾ ਪ੍ਰਤਾਪ ਜਿਹੜਾ ਹੈਗਾ ਸਾ ਐਸਾ ਹੈ ਕਿ ਉਹਦਾ ਤੇਜ ਹਮੇਸ਼ਾ ਜਗਮਗਤ ਰਹਿੰਦਾ ਜਿਵੇਂ ਸੂਰਜ ਹਰ ਵਕਤ ਇਸੇ ਹਿਸਾਬ ਨਾਲ ਰੋਸ਼ਨੀ ਦੇਈ ਜਾਂਦਾ ਸਾਨੂੰ ਚਾਹੇ ਦਿਖੇ ਚਾਹੇ ਨਾ ਦਿਖੇ ਜਾ ਸਾਨੂੰ ਨਹੀਂ ਦੀਦਾ 골 ਧਰਤੀ ਹੈ ਦੂਏ ਪਾਸੇ ਦੀਦਾ ਜਦੂਏ ਸਾਨੂੰ ਦੀਦਾ ਦੂਏ ਪਾਸੇ ਵਾਲੇ ਨੂੰ ਨਹੀਂ ਦੀਦਾ ਪਰ ਸੂਜ ਜਿਹੇ ਜਹਾ ਹੈ ਉਹੋ ਜਿਹਾ ਹੀ ਰਹਿੰਦਾ ਐ ਉਹ ਜਹਾ ਜਹਾ ਹੈ ਉਹੋ ਜਿਹਾ ਹੀ ਰਹਿੰਦਾ ਤੇਜ ਉਹਦਾ ਕਿਸੇ ਨੂੰ ਕਿਸੇ ਨੂੰ ਨਹੀਂ ਦੀਦਾ ਉਹ ਗੱਲਾਂ ਲੱਗਾਂ ਅੰਬਰ ਜ਼ਮੀਨ ਜੇ ਜਬ ਦੱਸ ਦਿੱਤਾ ਜਿਹਨੂੰ ਨਹੀਂ ਦੀਦਾ ਉਥੇ ਰਾਤ ਹੈ ਜਿਹਨੂੰ ਦੀਦਾ ਉਹਦੇ ਘਰ ਦੇ ਚੜਿਆ ਹੈ ਜਿਹਨੂੰ ਨਹੀਂ ਦੀਦਾ ਉਹਦੇ ਰਾਤ ਬਸ ਕੰਬੜ ਜਮੀਨ ਜਹ ਜਪ ਤਜਾਪ ਅੱਬਰ ਔਰ ਜਬੀਰ ਉਹਦਾ ਜਾਪ ਜਪਦੇ ਨੇ ਅੱਬਰ ਔਰ ਜਬੀਰ ਸਾਰੇ ਉਹਦਾ ਜਾਪ ਜਪਦੇ ਨੇ ਸਤੋ ਆਕਾਸ਼ ਸਤੋ ਪਤਾਲ ਸਤੋ ਆਕਾਸ਼ ਸਤੋ ਪਤਾਲ ਸੱਤੇ ਪਤਾਲਾਂ ਦੇ ਵਿੱਚ ਬਥਰੇ ਉਹਦੇ ਕਰਮ ਜਾਲ ਉਹਦਾ ਕਰਮ ਜਾਲ ਵਿਖਰਿਆ ਹੋਇਆ ਹੈ ਕਰਮ ਦਾ ਜਾਲ ਉਹਨੇ ਬਖੇਰਿਆ ਹੋਇਆ ਦੇਖੋ आखरी ਭਗਤੀ एक ਛੜ ਇੱਕ ਹੈਗੀ ਐ ਇਹ 72 ਸੀ 72 ਵੀ ਪੂਰੀ ਨਹੀਂ ਕੀਤੀ ਭਗਤੀ ਵਿਚਾਲੇ ਛੜਤੀ ਪੁਰਾਣੀ ਕੀਤਾ ਜੇ ਲੋਕ ਅਗਲਾ ਸਾਤੋਂ ਦਾ ਸਾਤੋਂ ਬਤਾਰ ਬਿਥਰੇ ਉਹ ਦਿਸ਼ਟ ਜਾਂ ਕਰਮਜਾਲ 72 ਨਹੀਂ ਲਿਖਿਆ ਹਮਕੋ 71 ਪੁਰਾ ਲਿਖੇ ਕਿ ਇੱਕ ਆਖਰੀ ਪੰਕਤੀ ਵਿਚਾਲੇ ਛੱਡ ਕੇ ਉਸ ਤੇਰੀ ਉਸਤਤ ਮੁੱਕ ਮੁੱਕਣੀ ਮੇਰੀ ਬਸ ਹੋ ਗਈ ਬਾਤ